ਸਲੋਕ ਮੁਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਕਰਮ ਕਮਾਏ ਸ਼ਬਦੈ ਸਿਉ ਚਿਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਏ ਜੋਤਿ ਸੁਭਾਵੈ ਸੋthi ਹੈ ਕਹਿਣਾ ਕਿਛੁ ਨਾ ਜਾਏ ਸਲੋਕ ਮੁਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਜਾਂ ਅੰਧੇ ਕਰਮ ਕਮਾਏ ਤੇ ਜੱਗ ਸੱਚੇ ਦੀ ਹੈ ਕੋਸ਼ਿਸ਼ ਸੱਚੇ ਕੱਢ ਕੇ ਬਾਹਰ ਸੁਬਾਹ ਅਸਲ ਵਿੱਚ ਜਿੰਨਾ ਚਿਰ ਸ਼ਰੀਰ ਤੋਂ ਆਤਮਾ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਦੀ ਜਾਣਦੀ ਉਹ ਰਾਜ ਜਿੱਤੇਗੀ ਆਪੇ ਤੱਕ ਜਦੋਂ ਸਾਰੇ ਸਰੀਰ ਨੇ ਇਹਨਾਂ ਨੂੰ ਆਤਮਾ ਨਾ ਜਾਣਦੀ ਜਿਹੜੇ ਆਪਣੇ ਆਪ ਨੂੰ ਸਰੀਰ ਸਮਝਦੇ ਜਿਹੜਾ ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਹੈ ਮੈਨੂੰ ਪਿਆਸ ਲੱਗੀ ਹੋਈ ਹੈ ਕਿ ਜਦ ਐਕਚੁਅਲੀ ਸਰੀਰ ਨੂੰ ਲੋੜ ਆੜੀ ਸਰੀਰ ਦਾ ਕਟਿਆ ਪਹਿੰਦਾ ਮੈਨੂੰ ਪਿਆਸ ਲੱਗੀ ਹੋਈ ਹੈ ਇਹ ਭਾਸ਼ਾ ਗੁਰਮੁਖੀ ਭਾਸ਼ਾ ਨਹੀਂ ਹੈ ਇਹ ਸੰਸਾਰੀ ਭਾਸ਼ਾ ਸੰਸਾਰ ਦੇ ਲੋਕਾਂ ਦੀ ਜਿਹੜਾ ਆਖਰੀ ਸੰਸਾਰ ਨਾਲ ਜੁੜਿਆ ਹੋਇਆ ਹੈ ਮਾਇਆ ਨਾਲ ਜੁੜਿਆ ਹੋਇਆ ਹੈ ਮਾਇਆ ਨੂੰ ਅਪਣੇ ਆਪ ਨੂੰ ਮਾਇਆ ਤੋਂ ਵੱਖਰਾ ਨਹੀਂ ਜਾਣਦਾ ਉਹ ਜੱਗ ਉਹਦੇ ਵਾਸਤੇ ਜੱਗ ਲੱਭ ਦੋਣ ਬਹੁਤ ਸਾਰੇ ਰੰਗ ਦੇ ਲੋਕਾਂ ਕੋਲ ਚੇਤਨ ਉਹ ਉਹ ਮੇਲੇ ਹੈ ਜੱਗ ਜਗ ਦੇ ਵਿੱਚ भी ਵੀ है पर ਪਰ कोई शहर नहीं है, ਹੈ ਬੇਗੰਬੋਲ ਨਹੀਂ ਹੈ ਜੱਗ ਤਾਂ है ਏ ਛੋਟੀ ਕੋਠੜੀ ਹੋ ਸ਼ਹਿਰ ਦਾ ਜਿਹੜਾ ਫਰਕ ਹੁੰਦਾ ਹੈ ਤੇ ਜਦੋਂ ਜੱਗ ਬਹੁਤ ਛੋਟਾ ਜਿਹਾ ਜਿਵੇਂ ਇੱਕ ਸ਼ਹਿਰ ਦੇ ਵਿੱਚ ਕੋਈ ਕੋਠੜੀ ਹੁੰਦੀ ਕੋਸ਼ੜੀ ਕਹਿਣਾ ਬਦਲਦਾ ਸ਼ਹਿਰ ਦੇ ਮੁਕਾਬਲੇ ਚ ਛੋਟਾ ਦੱਸ ਆਇਆ ਠੀਕ ਹੈ ਸ਼ਹਿਰ ਦੇ ਮੁਕਾਬਲੇ ਚ ਕੋਸ਼ੜੀ ਕਹਿ ਕੇ ਦੱਸਿਆ ਸ਼ਹਿਰ ਦੀ ਕੋਸ਼ੜੀ ਹੁੰਦੀ ਹੈ ਨਿੱਕ ਘਰ ਥੋੜਾ ਜੀ ਜਗਾ ਸਾਰਾ ਮਾਇਆ ਦਾ ਜਿਹੜੀ ਰਚਨਾ ਹੈ ਥੋੜੀ ਜੀ ਜਗਾ ਸੱਚਖੰਡ ਸੁਖਸੰਗਰ ਚ ਭਾਪਸਾਗਰ ਕੋਸ਼ੜੀ ਦੀ ਨਹੀਂ ਆਈ ਸੁਖਸਾ ਦਾ ਰੂਪੀ ਸ਼ਹਿਰ ਦੇ ਵਿੱਚ ਬੇਗੰਪੁਰੇ ਚ ਇਹ ਜਿਹੜਾ ਸਾਰਾ ਜਗ ਸੰਸਾਰ ਹੈ ਥੋੜੀ ਹੈ ਥੋੜੀ ਜਿਹੀ ਜਗਾਈ ਹੋਤੀ ਹੈ ਇਸ ਕਰਕੇ ਦਾ ਗਿਆਨ ਵੀ ਥੋੜਾ ਜਿਹਾ ਹੀ ਲੋਕ ਦਾ ਜਗ੍ਹਾ ਦਾ ਥੋੜਾ ਗਿਆਨ ਹੁੰਦਾ ਇਹ ਕੋਠੜੀ ਕੋਠੜੀ ਦਾ ਗਿਆਨ ਹੈ ਦਾ ਗਿਆਨ ਹੀ ਹੈ ਬੇਗੰਪੁਰਾ ਦਾ ਉੱਚਾ ਤੇ ਉੱਚਾ ਬੋਲ ਉਹਦਾ ਗਾਂਂਦੀ ਹੈ ਓਏ ਜਦੋਂ ਉਹਦੀ ਗੱਲ ਹੋਈ ਆ ਫਿਰ ਆ ਖੜੇ ਨੇ ਜਦੋਂ ਆਤਮਾ ਦੀ ਵੀ ਗੱਲ ਹੋਈ ਆ ਇਸ ਵੀ ਆ ਖੜੇ ਨੇ ਆਤਮਾ ਕਦੋਂ ਤੋਂ ਹੁੰਦੀ ਚਲੀ ਆਈ ਆ ਕੋਈ ਪਤਾ ਨਹੀਂ ਕਿਸੇ ਨੂੰ ਇਹ ਆ ਪਰੰਪਰ ਹੋਤਾ ਕਿੰਨੇ ਇਹਨਾਂ ਜਾਨ ਨੂੰ कोई ਲੈ ਕੋਈ ਨਹੀਂ ਦੱਸ को ਕਹਿ ਰਿਹਾ ਸਕੇ ਕੋਉ ਤੂੰ ਖਦ ਕਰ ਬੱਸ ਇਹ ਨਹੀਂ ਕੋਈ ਕਹਿ ਸਕਦਾ ਆਤਮਾ ਦੇ ਬਾਰੇ ਵੀ ਜਿਹੜਾ ਗਿਆਨ ਹੈ ਬਸ ਇੰਨਾ ਹੀ ਗਿਆਨ ਆ ਆਤਮਾ ਦਾ ਵੀ ਆਤਮਾ ਕੀ ਹੁੰਦੀ ਹੈ ਜੜ ਕੀ ਚੇਤਨ ਚੀਜ਼ ਕਿਵੇਂ ਬਣੀ ਆਤਮਾ ਕੋਈ ਪਤਾ ਨਹੀਂ ਕਿੱਥੋਂ ਆਈ ਕੋਈ ਪਤਾ ਨਹੀਂ ਕਦੋਂ ਤੋਂ ਆਇ ਕੋਈ ਪਤਾ ਨਹੀਂ ਆਤਮਾ ਕਹੇ ਜੀ ਹੁੰਦੀ ਆ ਕੀ ਹੁੰਦੀ ਉਸੇ ਨਹੀਂ ਦੱਸੀ ਇਹਦੇ ਬਾਰੇ ਹੋਰ ਕੁਝ ਨਹੀਂ ਤਾਂ ਕਿ ਆਪਣੇ ਆਪ ਨੂੰ ਪਛਾਣ ਲਈਏ ਅਸੀਂ ਜਿਹਨਾਂ ਦਾ ਆਪਣੇ ਆਤਮਾ ਨੂੰ ਪਛਾਣਣਾ ਆਤਮ ਚੀਨਣਾ ਆਤਮ ਖੋਜਣਾ ਇਹਨਾਂ ਕੇ ਗੱਲ ਹੈ ਜਿਹੜਾ ਫਰਦੂ ਇਹੀ ਏਡਾ ਪਹਾੜ ਬਣਿਆ ਪਿਆ ਹੈ। ਇਹ ਹੀ ਨਹੀਂ ਸਮਝ ਆਉਂਦਾ। ਏਡਾ ਏਡਾ ਗ੍ਰੰਥ ਲਿਖੇ ਗਏ। ਫੇਰ ਉੱਥੇ ਦਾ ਟੈਪੰਦਲਾ। ਸਮਝ ਫੇਰ ਨਹੀਂ ਆ ਰਿਹਾ। ਕਿਉਂਕਿ ਬਿਆਨ ਤੋਂ ਪਰੇ ਦੀ ਗੱਲ ਹੈ ਆਤਮਾ ਦਾ ਜਗਰ। ਇਹ ਬਿਆਨ ਤੋਂ ਪਰੇ ਦੀ ਗੱਲ। ਸਾਡੇ ਕੋਲ ਕੋਈ ਐਸਾ ਸਾਧਨ ਨਹੀਂ ਹੈ ਜਿਹੜਾ ਅਸੀਂ ਦੇਖ ਸਕੀਏ। ਆਤਮਾ ਨੂੰ ਪਕੜ ਸਕੀਏ। ਸਹੀ ਹੈ। ਆਤਮਾ ਨੂੰ ਸੁਭੂ ਸਕੀਏ। ਜਿਹੜੀ ਤੱਕ ਆਤਮਾ ਦਾ ਟੇਸਟ ਲੈ ਸਕੀਏ। ਆਤਮਾ ਦਾ ਕੋਈ ਟੇਸਟ ਲੈਂਦਗੇ ਭਾਵੇਂ। ਚਾਹ ਭਾਵੇਂ ਟੇਸਟ ਲੈਂਦੀਏ। ਚਾਹ ਨਾਮ ਦਾ ਟੇਸਟ ਲੈਂਦੀ ਆਤਮਾ ਤਾਂ ਖੁਦ ਟੇਸਟ ਆਪ ਲੈਂਦੀ ਆ। ਆਤਮਾ ਦਾ ਟੇਸਟ ਕੋਲੋਂ ਕੋਲੋਂ ਆਤਮਾ ਦਾ ਟੇਸਟ। जेडी आत्मा आप देख रही है उसको कौन देखूंगा इस करके आत्मदर्शन अपने आप रूप में देखना आत्म ज्ञान अपने आप रूप जानना अपे जबो अपना जब यही हो कर ताला खुल लियो या तो ਜੀ ਜੀ ਨੇ ਦਰਸ਼ਨ ਕਰਨਾ ਪ੍ਰਮਾਤਮਾ ਦਾ ਉਮਰ ਮੁਕ ਕੋਈ ਪ੍ਰਮਾਤਮਾ ਦੇ ਦਰਸ਼ਨ ਕਰਨਾ ਤੇ ਚੈਪਟਰ 2 ਪਰ ਜਾਣਣ ਦਾ ਹੈ ਇੱਥੇ ਜਾਣਣ ਦਾ परमात्मा ਕੀ ਹੈ ਇਹ ਜਾਣਣਾ ਹੈ ਦੀ ਇੱਕ ਅਵਸਥਾ ਹੈ ਪਰਮਾਤਮਾ ਬਣ ਜਾਣਾ ਜਿੰਨੇ ਆਤਮ ਚੀਨੇ ਆ, ਪਰਮ ਆਤਮ ਸੋਈ ਜਿਹਨੇ ਆਪਣਾ ਭਜਨ ਲਿਆ ਇਹ ਉਹ ਆਤਮ ਗਿਆਨ ਹੋ ਗਿਆ ਖੁਦ ਹੀ ਪਰਮ ਆਤਮ ਹੈ ਪਰਮਾਤਮਾ ਦਾ ਦਰਸ਼ਨ ਨਹੀਂ ਹੋਣਾ ਉਹ ਬਰਨ ਬਈ ਤੂੰ ਹੀ ਪਰਮ ਆਤਮ ਹੈ ਉਹ ਉਸ ਅਵਸਥਾ ਤੇ ਪਹੁੰਚ ਗਿਆ ਸ਼ਿਖਰ ਤੇ ਗੋਲੀਆਂ ਸੰਸਾਰ ਤੇ ਦੂ ਸ਼ਿਖਰ ਤੇ ਉਹ ਅਵਸਥਾ ਕੋਈ ਉੱਚੀ ਨਹੀਂ ਹੈ ਪਰਮ ਆਤਮ ਤੋਂ ਉੱਚੀ ਵਸਾ ਸੰਸਾਰ ਕੋਈ ਜਦੋਂ ਜੀ ਪਰਮ ਆਤਮਾ ਨੂੰ ਨੂੰ ਇੱਕ ਬੋਲਦੇ ਇੱਥੇ ਗਲਤੀ ਸੀ ਸਦੀ ਇਹ ਗਲਤੀ ਹੈ ਪਰਮ ਆਤਮਾ ਤਾਂ ਆਤਮ ਦੀ ਅਵਸਥਾ ਹੈ ਆਤਮ ਦੀ ਅਵਸਥਾ ਹੈ ਪ੍ਰਾਤਮਾ ਰ ਆਤਮਾ ਜਦ ਇੱਕ ਹੋ ਜਾਣੇ ਆਪਣੇ ਆਤਮਾ ਨੂੰ ਆਪਣੇ ਰੂਪ ਨੂੰ ਜਾਣ ਕੇ ਆਤਮਾ ਰੇ ਜਾ ਪਰਮ ਆਤਮਾ ਲੀਨ ਹੋ ਜਾਣ ਇਹ ਬ੍ਰਹਮ ਵਿੱਚ ਲੀਨ ਹੋ ਜਾਣਾ ਬ੍ਰਹਮਾਨ ਹੈ ਉਹ ਆਪ ਹੀ ਪਰਮ ਆਤਮਾ ਇਹ ਦੂਜੀ ਅਵਸਥਾ ਕੋਈ ਇਹ ਅਸੀਂ ਸਤ ਸੰਤੋਖ ਦੀ ਰਸਤਾ ਵੀ ਕਹਿ ਸਕਦੇ ਹਾਂ ਇਹ ਇਸ ਅਵਸਥਾ ਦੇ ਵਿੱਚ ਲੜਾਈ ਸ਼ੁਰੂ ਹੁੰਦੀ ਹੈ ਇਸ ਅਵਸਥਾ ਦੇ ਵਿੱਚ ਲੜਾਈ ਸ਼ੁਰੂ ਹੁੰਦੀ ਹੈ ਸਤ ਸੰਤੋਖ ਲੈ ਲੜਨੇ ਲੱਗ ਇੱਥੇ ਆ ਕੇ ਪੁੰਨ ਪਾਪ ਬਰਾਬਰ ਬਣਦਾ ਨਹੀਂ ਬਣਦਾ ਹੀ ਦੁਆਏ ਦਰਬਾਜਾ ਇਹ तो पहला ਪੁਰਬਾਪ ਨੂੰ ਮੰਨੂਗਾ ਜਿਹੜੇ ਮਾਰਕਰ ਦੇ ਪੁਰਬਾਪ ਨੇ ਨਾ ਉਹਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ ਉਹਨਾਂ ਚ ਚਾਹੇ ਉਹ ਮੂਲ ਨਾਲ ਜੋ ਮਰਜੀ ਕਹੀ ਜਾਵੇ ਪਰ ਅੰਦਰ ਪੁਰਨ ਕਰਕੇ ਰੂ ਖੁਸ਼ੀ ਹੋਊਗੀ ਥੋੜੀ ਜੀ ਜ਼ਰੂਰ ਜਿਹਨੂੰ ਇਹ ਪਾਪ ਮੰਨਦਾ ਰਿਹਾ ਪਿੱਛੋਂ ਦਾ ਸੰਸਾਰ ਮੰਨਦਾ ਉਹ ਕਰੇ ਤੇ ਰਹੂਗਾ ਉਹ ਰੋਇਦ। ਥੋੜਾ ਹੋਵੇ ਕਹੇ। ਜੇ ਪੱਤੇ ਜਾਂ ਡਿੱਗ ਬੰਦੇ ਨੇ ਤਰਹ ਦੇ ਝੜ ਜਾਂਦੇ ਨੇ। ਛਾਂ ਉਦੋਂ ਵੀ ਉਹਦੀ ਹੁੰਦੀ ਐ। ਹਰਾ-ਭਰਾ ਪੱਤਿਆਂ ਦਾ ਹੁੰਦਾ ਉਹ ਛਾਂ ਹੋਰ ਹੁੰਦੀ ਐ। ਹੂੰ। ਤਾਂ ਉਹ ਵੀ ਰਹਿੰਦੀ ਐ। ਬੱਤੀ ਛਾਂ ਪਤਰਾ ਦੀ ਗਾੜੀ ਛਾਂ ਹੁੰਦੀ ਐ। ਫੇਰ ਪਰਮ ਬਣਿਆ ਰਹਿੰਦਾ ਉਹ ਹਜਾ ਰਹਿੰਦਾ ਜਿਵੇਂ ਡੁੱਡ ਦਰਾ ਫਦਾ ਹੁੰਦਾ ਪੱਤਿਆਂ ਤੋਂ ਬਿਨਾਰਾ ਟਾਹਣੀਆਂ ਵੀ ਨੇ ਨਾਜ਼ ਖਤ ਦਾ ਸੁੱਕ ਜਾਂਦਾ ਪਰਮ ਦਾ ਪੇੜ ਦੇ ਪੱਤੇ ਟਣ ਝੜ ਜਾਂਦੇ ਨੇ ਟਾਹਣੀਆਂ ਝੜ ਜਾਂਦੀਆਂ ਨੇ ਪਰ ਪੇੜ ਤਾਂ ਖੜਾ ਹੈ ਜੀ ਉਹਨਾਂ ਭਰਮ ਫੇਰ ਬਣਿਆ ਰਹਿੰਦਾ ਹਾਂ ਉਹ ਗੂਟਾ ਖੜਾ ਹੈ ਜੋ ਉਹਦਾ ਨਾਸ਼ ਫਿਰ ਜ਼ਦੇ ਇਹ ਹੁੰਦਾ ਹੈ ਜਦ ਉਹਦਾ ਨਾਸ਼ ਉਹ ਕਰਦਾ ਜਿਹਨੇ ਉਹ ਪੈਦਾ ਕੀਤਾ ਉਹ ਆਪ ਨਾਵੇਂ ਨਾਸ਼ ਕਰ ਦਿੰਦਾ ਤਾਂ ਤੋਂ ਉਹ ਸਮਰੱਥ ਹੈ ਜਿਹੜਾ ਉਹਦਾ ਨਾਸ਼ ਕਰ ਉਹ ਸਮਰੱਥ ਹੈ ਉਹ ਚੇਤਨ ਜਿਹੜਾ ਗਿਆਨ ਆ ਉਹਦੇ ਨਾਲ ਸਾਰੇ ਪੱਤੇ ਹੀ ਝੜਦੇ ਨੇ ਪੇੜ ਸੁੱਕਦਾ ਹੈ ਕਰਮ ਹੀ ਨਾਸ਼ ਹੈ ਜਿਹੜਾ ਅਸੀਂ ਕਰਨੋਂ ਬੰਦੇ ਸੀ ਪੁਰਜ ਪਾਪ ਉਹਦਾ ਨਾਸ ਹੋਇਆ ਜਿਹੜਾ ਕੰਮ ਕਰਦੇ ਸੀ ਸੋਚਦੇ ਸੀ ਉਹਦਾ ਨਾਸ ਹੋਇਆ ਸੋਚਦੇ ਦਾ ਨਾਸ ਹੋਇਆ ਆਪਣੀ ਤੌਰ ਕੀ ਹੋਇਆ ਪਰ ਨਾਮ ਕੀ ਹੈ ਇਹ ਤਾਂ ਇਹ ਬਦਲ ਗਿਆ ਆਤਮ ਗਿਆਨ ਹੋ ਗਿਆ ਆਤਮ ਗਿਆਨ ਦੇ ਬਣੋ ਆਤਮਿਕਾਂ ਤੋਂ ਬਾਅਦ ਉਹ ਜਿਹੜਾ ਭਰਮ ਕਾ ਨਾਲ ਸੁਣ ਅੰਡੇ ਤੋਂ ਬਾਹਰ ਆਉਂਦਾ ਚਲੋ ਬੱਚਾ ਪੂਰਾ ਹੈ ਅੰਡੇ ਦੇ ਵਿੱਚ ਉਹਨੂੰ ਪਤਾ ਹੈ ਮੈਂ ਅੰਡੇ ਦੇ ਵਿੱਚ ਪਰ ਅੰਡੇ ਦੇ ਬਾਹਰ ਆਉਣਾ ਚਾਹੁੰਦਾ ਜਿਉਂਦਾ ਜਿਉਂਦਾ ਹੋ ਪਰ ਅੰਡੇ ਦੇ ਤਾਂ ਵਿੱਚ ਹੈ ਅੰਡੇ ਦੇ ਬਾਹਰ ਉਹ ਹੋਰ ਗੱਲ ਆਂਡੇ ਦੇ ਵਿੱਚ ਉਹ ਨਾ ਗੱਲ ਐ ਉਹ ਜੀਵਨ ਹੈ ਉਹ ਤਾਂ ਦੇ ਵਿੱਚ ਹੈ ਪਰ ਉਹਦੇ ਅੰਡੇ ਦੇ ਵਿੱਚ ਹੀ ਹੈ ਜੋ ਪਰ ਜਦ ਬਾਹਰ ਆਉ ਬਾਰੇ ਦੁਨੀਆ ਤਾਂ ਦੇਖਣਾ ਐ ਜਦ ਉਹ ਬਾਹਰ ਜਾਉ ਰਾਮ ਗਰਭ ਤੋਂ ਫਿਰ ਦੇਖਣਾ ਸੱਚਾ ਛੋੜਦਾ ਐ ਜਦ ਰਾਮ ਗਰਭ ਦੇ ਵਿੱਚ ਹੀ ਹੋ ਤੱਕ ਜਦ ਹਮ ਰਾਮ ਗਰਭ ਹੋਏ ਹੋਇਆ ਤੇ ਲਿਖੇ ਓਏ ਆਏ ਅੰਦਰ ਕੀ ਉਹ ਗਿਆ ਵੇ ਉਹ ਗਿਆ ਅਗੇ ਉਹ ਦਾ ਮਤਲਬ ਬਾਹਰ ਨਿਕਲੇ ਓਏ ਘਰ ਆਏ ਓਏ ਆਏ ਰਾਮ ਘਰ ਦੇ ਵਿੱਚ ਉਹ ਵੀ ਹਰ ਰਾਮ ਅੰਦਰ ਲੱਗਾ ਨਾ ਬਾਹਰ ਆ ਗਿਆ ਜਦ ਓਏ ਆਏ ਆਕੇ ਵਜੂਦ ਵਿੱਚ ਜਿਹੜੀ ਅਸੀਂ ਸਰੀਰ ਧਾਰਨ ਕੀਤਾ ਰਾਮਗਰਮ ਵਿੱਚੋਂ ਇਹ ਸਰੀਰ ਧਾਰਨ ਕੀਤਾ ਹੁ ਹੋਇਆ ਇਹ ਦਾ ਮਤਲਬ ਇਹ ਹੋਏ ਵਜੂਦ ਵਿੱਚ ਆਏ ਸਾਡਾ ਵਜੂਦ ਬਣਿਆ ਬਾਹਰ ਆ ਕੇ ਰਾਮਗਰਮ ਚੋਂ ਬਾਹਰ ਆ ਕੇ ਜੋ ਅਸੀਂ ਸਰੀਰ ਧਾਰਨ ਕੀਤਾ ਜਦੋਂ ਤੋਂ ਇਹ ਹੋਇਆ ਇਹਦਾ ਮਤਲਬ ਹੈ ਸਚ ਤੋਂ ਹੈ ਐਸੇ ਗ੍ਰਾਹਕ ਬਹੁਤ ਗੁਸਾ ਬਸਾਏ ਇਹ ਜੇ ਘਰ ਅਸੀਂ ਬਹੁਤ ਬਸਾਏ ਨੇ ਸਰੀਰ ਵਰਗੇ ਪਰ ਜੇ ਦਰਬ ਜੋ ਬਾਹਰ ਬਲੂ ਤਾਂ ਇਹ ਸਰੀਰ ਬਸਾਉ ਘਰ ਬਣੂ ਉਹ ਰਾਮਗਰਜ ਬਾਹਰ ਬਾਹਰ ਕੀ ਭਾਵ ਹੈ ਜਿਆ ਜੋਰ ਬਾਹਰ ਹੁੰਦੀ ਹੈ ਚੋ ਰਾਮ ਗਰਬੋ ਹੈ ਹੋਰ ਕੀ ਅੰਗਰ ਹੋਰ ਰਾਮ ਗਰਬ ਤੋਂ ਚੇਤਨ ਜੇ ਖਿੰਚਤੇ ਜਬਲੀ ਨਾ ਜਿੱਥੇ ਤੇਜ ਖਿੱਚਿਆ ਗਿਆ ਗਿਆ ਬਾਹਰ ਆ ਗਿਆ ਦਾ ਰਾਮ ਜਦੋਂ ਬਾਹਰ ਆਉਂਦਾ ਉਦੋਂ ਜਨਮ ਬਾਹਰ ਚੱਲਦਾ ਹੁੰਦਾ ਆਪਾਂ ਕਹਿੰਦੇ ਪ੍ਰਕਾਸ਼ ਹਮਾਰਾ ਪਿਓ ਪ੍ਰਕਾਸ਼ ਹੋਤੇ ਹੋਏ ਜਨਮ ਪਾਉਂਦਾ ਸਾਬ ਹੋਇਆ ਪੇ ਸਰੀਰ ਇਹਦਾ ਮਤਲਬ ਜਿਹੜੀ ਦੋ ਦੀ ਹੈਗੇ ਦੋ ਦੇ ਬਿਨਾਂ ਸਰੀਰ ਤੇ ਵਿਸਤਾਰ ਕਰੂਗਾ ਦੋ ਹੋਏ ਤੋਂ ਬਿਨਾਂ ਅਰ ਦੋਰ ਦੇ ਸਮੋਹਣਾ ਇਹ ਰਾਮ ਗਰਭ ਚੋਂ ਬਾਹਰ ਨਿਕਲ ਕੇ ਇਹਦਾ ਵजूद ਬਣਦਾ ਪਹਿਲਾਂ ਨਹੀਂ ਬਣਦਾ ਫਿਰ ਨਹੀਂ ਤਾਂ ਬਰ ਹੁੰਦੇ ਆਂਡੇ ਦੇ ਵਿੱਚ ਤ੍ਰੇਤੇਜ ਹੈ ਉਹੀ ਇੱਕ ਮਹੀਨਾ ਜਿਹੜਾ ਫालतੂ ਗਿਣਿਆ ਜਾਂਦਾ ਕੋਈ ਉਹ ਇੱਕ ਮਹੀਨੇ ਦਾ ਕੀ ਭਾਵ ਹੈ ਇੱਕ ਮਹੀਨਾ ਮਲ ਚੇਤਨਾ ਨੂੰ ਬਾਹਰ ਜਦੋਂ ਇਹ ਬਾਹਰ ਕਰ ਗਿਆ ਠੀਕ ਹੈ ਨਹੀਂ ਹਮ ਦੇ ਬਾਅਦ ਪਤਾ ਲੱਗਦਾ ਜਾਨ ਇਹਨਾਂ ਬਾਅਦ ਸਮੁੰਦਰ ਜਦ ਕਰੇ ਨਰ ਚੇਤਨ ਨੂੰ ਸੰਬੋਧਨ ਆ ਵੀ ਜਦੋਂ ਗਰਭ ਗੁੰਡਲ ਆਉਂਦਾ ਰੇਤੇ ਸੰਸਾਰ ਨੂੰ ਪਤਾ ਬਾਹਰ ਉਹ ਹੱਥ ਤੱਕ ਜਾਂ ਤੂੰ ਹੈਗਾ ਸੀਗਾ ਨਿਕੀ ਇਹਦਾ ਧਿਆਨ ਲੈ ਲਓ ਚੇਤਨਾ ਆਦਿ ਪਹਿਲੇ ਉਹਦਾ ਹੋਰ ਮਾਇਆ ਦੀ ਹੈ ਪ੍ਰਾਪਤੀ ਉਹ ਸੱਚ ਦੀ ਨਹੀਂ ਆਪਣੇ ਮੂਲ ਨਾਲ ਜੁੜਦੀ ਪ੍ਰਾਪਤੀ ਹੈ ਮੂਲ ਤੋਂ ਤੇ ਛੁੱਟ ਹੈ ਮੂਲ ਤੋਂ ਸਭੋ ਬਾਹਰ ਆ ਕੇ ਮਾਇਆ ਨਾਲ ਜੁੜਦੇ ਉਹਨੂੰ ਉਹਦਾ ਧਿਆਨ ਦੇਣਾ ਪ੍ਰਕਾਸ਼ ਜੋ ਦੇ ਉਹ ਜੋਤਰੂਪ ਬੋਲ ਰਿਹਾ ਹੈ ਨਹੀਂ ਜੋਤਰੂਪ ਨਹੀਂ ਆਇਆ ਪ੍ਰਕਾਸ਼ ਹੋਇਆ ਹੈ ਜੀ ਦਿਵਸ ਸਾਲੇ ਚੋ ਬਾਹਰ ਨਿਕਲੇ ਜੋਤ ਬਣੀ ਅਸੀਂ ਛੂਹੀ ਰਹੀ ਸੁਰਤ ਪ੍ਰਭ ਗਰਭ ਤੇ ਦੀ ਅਵਸਥਾ ਨੂੰ ਕਹਾਂਗੇ ਹਾਂ ਦੇ ਗਰਭ ਵਿੱਚ ਹੀ ਦੇ ਅੰਦਰ ਹੀ ਹੋਇਆ ਸੀ ਸਮਝੇ ਸੁਰਤਿ ਅੰਦਰੇ ਸੀ ਆਪਣੇ ਤੇ ਜਦੋਂ ਸੁਰਤ ਦੁਬਾਰਾ ਅੰਦਰ ਜਾਂਦੀ ਹੈ ਸਾਡੇ ਉਦੋਂ ਵੀ ਤ੍ਰੇਤੇ ਦੀ ਅਵਸਥਾ ਹੀ ਬਣਦੀ ਹੈ ਜਿਹ ਕਹਿੰਦਾ ਬਾਪ ਜਿਹੜੀ ਜਿਹੜੀ ਅਵਸਥਾ ਹੈਗੀ ਹੈ ਇਹਦੀ ਸਤ ਸੰਤੋਖ ਦੀ ਅਸਲ ਵੀ ਤ੍ਰੇਤੇ ਦੀ ਅਵਸਥਾ ਹੈ ਤੇ ਦੀ ਅਵਸਥਾ ਉਹ ਹੀ ਹੋਣੀ ਹੈ ਜਿਹੜੀ ਤੇਰੇ ਤੇ ਹੈ ਅਸਲ ਤੇਰੇ ਤੇ ਹੀ ਸੱਚ ਕੋ ਚਾਹਦਾ ਸੀ ਐ ਨਹੀਂ ਅਸਲ ਵਾਪਸ ਬੋਲਦੇ ਜਿਹੜੇ ਰਸਤੇ ਆਏ ਉਹ ਸਰਪੇਸ਼ੁਰਾਸ ਤੋਂ ਆਇਆ ਲੱਗਦਾ। ਬਸ ਉਹ ਜਿਹੜਾ ਭਰਮ ਦੇ ਅੰਡੇ ਚ ਆਂਡਾ ਹੀ ਫੁੱਟਣਾ। ਅੰਡੇ ਜਾ ਗਿਆ। ਅੰਡਾ ਹੀ ਫੁੱਟਣਾ। ਇਹ ਕਿਉਂ ਜਿਹੜਾ ਇਹ ਤੈਨੂੰ ਸਦਾ। ਨਹੀਂ ਕਿ ਭਰੂਣ ਬਾਹਰ ਜਵਣ ਦਾ ਚੇਤਨ ਪਹਿਲਾਂ ਆਇਆਗਾ ਇਹ। ਲੱਗਿਆ ਜਦੋਂ ਤਾਂਹੀਂ ਪਰ ਉਹ ਸਰੀਰ ਸ਼ੁਰੂ ਹੋ ਗਿਆ ਮਨੋ ਪਰ ਮਿਲਦਾ ਉਹਦੇ ਨਹੀਂ ਸ਼ੁਰੂ ਹੋ ਗਿਆ। ਪੰਜ ਤਤ ਲੈ ਕੇ ਨਾ ਭੂ ਨੂੰ ਬਣਾਉਂਦੇ। ਵਿੱਚ ਦੇ ਵਿੱਚੇ ਹੈ ਉਹ। ਥੋੜਾ ਜਿਹਾ ਪਤਾ ਕਿੰਨੇ ਦਾ। ਕਿ ਆਪਾਂ ਨੂੰ ਮਹੀਨਾ ਪਹਿਲਾਂ ਬਾਅਦ ਚ ਪਤਾ ਲੱਗਦਾ ਜਾਨੀ ਕਿ ਉਹ ਲੋ ਤੋਂ 4000 ਦਾ ਬਾਅਦ ਉਹਦਾ ਨਾਖਿਆ ਲੇ ਕੇ। ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਪਤਾ ਲੱਗਦਾ। ਕਿਵੇਂ ਪਤਾ ਲੱਗਦਾ? ਪਤਾ ਲੱਗਦਾ। ਦੁੱਧ ਜਿਆਦਾ ਜਾਗ ਵਾਲਾ ਨੇ ਜਿਹਦਾ ਜੇ ਦੁੱਧ ਪੂਰਾ ਹਿੱਲਦਾ ਹੈ ਉਹਵੇਂ ਜਿਆਦਾ ਥੋੜਾ ਜੰਮਣ ਲੱਗਦਾ ਜਿਵੇਂ ਪਤਾ ਲੱਗਦਾ ਵੀ ਹਾਂ ਜੰਮਣ ਲੱਗ ਗਿਆ ਉਹਨੇ ਐਕਸ਼ਨ ਕੀਤਾ ਜਾਂ ਨਹੀਂ ਕੀਤਾ ਜਾਗ ਨੇ ਕੀ ਪਤਾ ਲੱਗੂ ਤੈਨੂੰ ਇਹਦਾ ਐਕਸ਼ਨ ਕਰੂਗਾ ਤਹੀਂ ਪਤਾ ਲੱਗੂ ਗੜਾ ਹੋਣਾ ਗੜਾ ਹੋਣ ਪਤਾ ਲੱਗਿਆ ਪਤਾ ਲੱਗੂਗਾ ਜਾਗ ਨੇ ਕੰਮ ਕਰਤਾ ਫੇਰ ਕਿ ਉਹ ਕਿਵੇਂ ਪਤਾ ਨਹੀਂ ਤੁਹਾਨੂੰ ਉਹ ਪੌਂਦੇ ਸਾਨੂੰ ਦੁੱਧ ਚਾਹੋ ਤੁਸੀਂ ਛੱਡੀ ਲੱਸੀ ਪਾਤੀ ਉਹ ਵੀ ਉਹੀ ਹੋਵੀ ਹੋਈ ਹੈ ਨਹੀਂ ਉਹ ਤਾਂ ਵੀ ਠੀਕਾ ਹੋੜੀ ਅਸਲ ਉਹ ਵੀ ਕਰਵੇ ਇੱਕ ਮਹੀਨੇ ਸਾਨੂੰ ਪਤਾ ਬਾਅਦ ਲੱਗਦਾ ਪਰ ਐਕਸ਼ਨ ਤਾਂ ਉਹਦੇ ਸ਼ੁਰੂ ਹੋ ਗਿਆ ਨਾ ਹਾਂ ਐਕਸ਼ਨ ਸ਼ੁਰੂ ਹੋ ਗਿਆ ਐਕਸ਼ਨ ਸ਼ੁਰੂ ਕਰਨਾ ਹੀ ਉਹਨੇ ਐਕਸ਼ਨ ਜੇ ਸ਼ੁਰੂ ਨਾ ਹੁੰਦਾ ਤਾਂ ਫਿਰ ਦਾਸ ਦਾ ਕਾਹਦਾ ਲੈਦੇ ਲੋੜ ਲਾ ਦੀਵਾ ਇਹ ਜੁੜ ਕੇ ਕਹਦੇ ਕਾਹਦੇ ਇਹ ਮਹੀਨੇ ਇਹ ਤੇ ਨਹੀਂ ਪ੍ਰਵਾਹਿਆ ਮਾਰਾ ਪਿਓਲੀ ਗੱਲ ਹੈਣੀ। ਬਈ ਮਹੀਨੇ ਬਾਅਦ ਸ਼ਰੀਰ ਸ਼ੁਰੂ ਹੋਇਆ ਬਣਾ। ਜੀ ਤਾਂ ਉਹ ਹੀ ਮਿਲ ਗਿਆ ਤਾਂ ਹੀ ਉੱਥੋਂ ਆ ਕੇ ਬੈਠੇ ਹੋ। ਸ਼ਰੀਰ ਬਾਹਰ ਨਾ ਹੈ ਹੀ ਨਹੀਂ। ਉਹਨਾਂ ਦਾ ਬਾਹਰ ਦਾ ਮਿੱਟੀ ਲਾਈ ਆਪਣੇ ਆਪ ਨੂੰ, ਮਿੱਟੀ ਲਾਈ ਹੈ ਬਾਹਰ ਤਾਂ ਉਹ ਲਾਗਦੇ ਬਾਹਰ ਲੰਗੋਲੇ ਹੋ। ਉਹ ਹਾਰਡ ਮਾਸ ਨਾੜੀ ਦਾ ਪਿੰਜਰ। ਆਪ ਪੰਛੀ ਜਿਹੜੀ ਸਰੀਰ ਮੰਦਿਆ ਅਸੀਂ ਦਰਹੋਲਾ ਜਿਹਨਾਂ ਪੰਛੀ ਆ ਉਹ ਅਸਲ ਦੇ ਵਿੱਚੋਂ ਹਾਂ ਉਹ ਪ੍ਰਕਾਸ਼ ਆ ਜਦੋਂ ਇਹ ਚੇਤਨਾ ਉਹਨੇ ਜਦ ਤੇਜ ਆਪਣਾ ਬਾਹਰ ਛੱਡਿਆ ਉਦਕਰਖ ਕੀਤਾ ਉਦਕਰਖ ਕੀਤਾ ਜਦ ਕਰਾ ਕਰ ਪ੍ਰਜਾ ਤਤ ਤਾ ਦੇਹ ਦੇ ਦਰਸੂ ਸਾਰਾ ਦਾ ਤੇਜ ਅੰਦਰ ਲਖ ਚੱਲਦਾ ਸਾਰਾ ਤੇ ਛੜਦਾ ਟਾਰਚ ਵਿੱਚੋਂ ਲਾਈਟ ਬਾਰ ਵੀ ਹੋਦੀ ਸੋਚੋ ਕਰ ਲਓ ਬਸ ਪਰ ਬੰਦ ਹੁੰਦੀ ਹੈ ਬਾਰ ਹੁਣੀ ਬੰਦ ਹੋ ਹੈ ਪ੍ਰੇਤੇ ਦਾ ਕੋ ਜੋਗਾ ਪੀਰੀਅਡ ਦਾ ਹੈਗਾ ਆ ਰੋਣੀ ਲਾਈਟ ਬੰਦ ਹੋ ਗਈਂ ਫਿਰ ਤਾਂ ਆ ਹੁਣ ਜਿਹਦੇ ਨਿਕਲਦਾ ਸਰੀਰ ਸੀਗਾ ਉਹੀ ਵੱਡਾ ਹੋਇਆ ਐ ਨਹੀਂ ਹੈ ਨਹੀਂ ਨਹੀਂ ਨਹੀਂ ਚੜ ਸਵੇਰ ਟੁੱਟ ਜਾ ਬਾਵਾ ਜਿੰਨ ਬੇਰਾ ਕਭੀ ਤੱਕ ਪਤਾ ਨਹੀਂ ਲੱਗਣਾ ਕਬੀਰ ਦੀ ਬਾਣੀ ਨੂੰ ਵੇਖਿਆ ਗੁਰਬਾਣੀ ਨੇ ਕੀਤੀ ਗੱਲ ਕਲੀਅਰ ਕਬੀਰ ਤੋਂ ਹੋਣੀ ਜਾਦਾ ਸੀ ਛੱਡ ਕੇ ਕਬੀਰ ਨੂੰ ਪਿੱਛੇ ਚਲੇ ਜਾਂਦੇ ਸਮਝੇ ਵੀ ਗੱਲ ਕਦੇ ਵੀ ਉਹਦਾ ਰਾਂਗ ਤੋਂ ਸ਼ੁਰੂ ਕਰਦੇ ਨੇ ਉਹਨਾਂ ਦੇ ਗੱਲ ਅੰਦਰ ਅਸਲ ਦੇ ਵਿੱਚ ਨਾਂਕ ਦੀ ਇੱਜ਼ਤ ਜ਼ਿਆਦਾ ਕਬੀਰ ਦੀ ਘਟ ਹੈ ਉਹਨਾਂ ਦੀ ਅੱਖੇ ਗੜੀਏ ਦ੍ਰਿਸ਼ਟੀ ਦੇ ਫਰਕ ਦਾ ਨੀਅਤ ਦੇ ਵਿੱਚ ਫਰਕ ਪੈ ਗਿਆ ਖੋੜ ਪੈ ਗਈ ਨੀਅਤ ਚ ਉਹਦਾ ਸਮਝ ਕਿਉਂ ਆਵੇਗਾ ਲਈ ਨਾ ਅੰਦਰ ਖੋਟ ਹੈ ਸੇ ਖਾਂਦੇ ਅੰਦਰ ਖੋਟ ਹੈ ਲੈ ਕੇ ਨਹੀਂ ਦੇ ਵਿੱਚ ਖੋਟ ਵਾਲੇ ਨੂੰ ਕੋਈ ਨਹੀਂ ਸਮਝ ਆਉਂਦਾ ਪਪਕ ਰਵਿਦਾਸ ਦੀ ਉਹ ਨਹੀਂ ਹੈ ਨਹੀਂ ਹਾਂ ਰਵਿਦਾਸ ਦੀ ਕੌਣ ਕਰਦਾ ਇਹਨਾਂ ਨੇ ਮਗਰ ਰਵਿਦਾਸ ਕੀ ਨਾਲ ਉਹ ਆ ਤੁਸੀਂ ਉਹਦੀ ਗੱਲ ਕਰੋ ਕਰਨਲ ਦੀ ਗੱਲ ਕਰੋ ਕਰਨਲ ਦੀ ਗੱਲ ਕਰੋ ਜਨਰਲ ਦੀ ਸਪਾਈ ਦੀ ਕੀ ਗੱਲ ਪਾਸਟਰ ਨੂੰ ਸਪਾਈ ਦੱਸਦੇ ਲੱਗ ਗਏ ਮਹੱਲਾ ਮਹੱਲਾ ਪਤਾ ਹੋਣਾ ਚਾਹੀਦਾ ਉਹ ਤਾਂ ਹੁਣ ਰੱਖਣ ਲੱਗੇ ਨੇ ਨਹੀਂ ਅੱਡ ਅੱਡ 2 100 ਇਕੱਠੇ ਹੋ ਗਏ ਸਾਡਾ ਆਰਡਰ ਖੜਾਏ ਤੁਸੀਂ ਉਹਨਾਂ ਆਰਡਰ ਹਾਂਜੀ ਚੱਲ ਜੀ ਸ਼ਲੋਕ ਮਹਲਾ 3 ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਸਾਡੇ ਕਰਤਮਾਏ ਬਿਨ ਸਤਗੁਰ ਭੇਟੇ ਜਗ ਅੰਧ ਹੈ ਜੇ ਸਤਗੁਰ ਨੂੰ ਨਾ ਸਤਗੁਰਾਂ ਦੀ ਦਾ ਇੱਥੇ ਵੱਡੀ ਲੱਗੀ ਪਈ ਆ ਉਹਨੇ ਬੰਦੇ ਨਹੀਂ ਜਿਹਨੇ ਸਤਗੁਰ ਨੇ। ਫੇਟ ਬੈਠੇ ਦਾ ਮਤਲਬ ਨਹੀਂ ਹੈ। ਜਿਹੜਾ ਸੰਸਾਰ ਨੇ ਸਤਗੁਰ ਬੈਠਿਆ ਉਹ ਸਤਗੁਰ ਹੁੰਦਾ ਨਹੀਂ ਤਾਂ ਕਰਕੇ ਗੱਲ ਕਹਿ ਰਿਹਾ ਨਾ। ਸਤਗੁਰ ਬੋਲਦਾ ਖਬਰ ਦਾ ਪਾਵਨ ਨਰੇ। ਪਰ ਅੰਦਰ ਕੋਈ ਢੋਲੇ ਵੀ ਬਾਹਰ ਢੋਣ ਦੇਣੇ ਤਾਂ ਸਾਡੇ ਸਤਗੁਰੂ ਬਾਹਰ ਸਾਡਾ ਸਤਗੁਰੂ ਨਾਨਕਾ ਢੋਲ ਲਾਉਂਦੇ ਤਾਂ ਢੋਲ ਦੇ ਸਰੂਰ ਨਾਨਕ ਪ੍ਰਗਟਿਆ ਕੁਝ ਲਾਉਣ ਦਿੱਤ ਨਾਉਂ ਦੇ ਨਾਨਕ ਮਿਲੇ ਨਾ ਲੋਬ ਮਿਲਤੇ ਲੋਬੇ ਨਾ ਰਾਗਨ ਚੇ ਨਾ ਨਾ ਆ ਨਾ ਤੁਹਾਡਾ ਘੜਾ ਛੁੱਟੇ ਹੋ। ਇਹ 84 ਜੋ ਘੜਾ ਨਹੀਂ ਛੁੱਟਣਾ ਜਿੰਨਾ ਜਨਨ ਨੂੰ ਰੋੜਦੇ ਰਹੋਗੇ ਉਹ ਕ੍ਰਿਸ਼ਨ ਨੂੰ ਤੁਸੀਂ ਨਾਨ ਨੂੰ ਕੋਈ ਰਾਮਚੰਦ ਨੂੰ ਨੂੰ ਨਾ ਤੁਸੀਂ ਰੋੜ ਰੋੜ ਲਾਗੇ। ਬਸ ਕੋਈ ਰਾਹ ਰਾਹ ਹੋ ਗਿਆ ਨਾ। ਜਿੱਥੇ ਤੁਮ ਲੜਦੇ ਕੋ ਹਮ ਲੜ ਕੇ ਲੜਦੇ ਰਹੋ। ਇਹ ਉਸ ਬੰਦੇ ਨੇ ਤਾਂ ਹਿੰਦੂ ਬਣਾਤਾ। ਇਹ ਗੱਲ ਕਹਿ ਕੇ ਪਤਾ ਨੀ ਲੱਗਿਆ ਨਾਨੂ ਕੀ ਕਹਿਆ ਮੈਨੂੰ ਸਤਗੁਰੂ ਭੇਟੇ ਜਦ ਆਂਦਾ ਹੈ ਅੰਧੇ ਕਰਮ ਕਮਾਏ ਅੰਧੇ ਕਰਮ ਅੰਧੇ ਕਰਮ ਨੇ ਜਿਹੜੇ ਅੱਜ ਜਿਹੜਾ ਹਿੰਦੂ ਨਾ ਸੀ ਸਿੱਖ ਵੀ ਅੰਨਾ ਸਿੱਖ ਹਿੰਦ ਸਿਕਾਈ ਨਹੀਂ ਸਿੱਖਣਾ ਨਹੀਂ ਵੈਸੇ ਹੁੰਦਾ ਸਿੱਖ ਹੋਵੇ ਤਾਂ ਨਹੀਂ ਅੰਨਾ ਇੱਕ ਹੋਵੇ ਤਾਂ ਨਹੀਂ ਨਾ ਸਿੱਧਾ ਕਿ ਕਰ ਦੇ ਦੱਦ ਲਈ ਗਿਆ ਕਿ ਕਿ ਹੋ ਗਿਆ ਸਿੱਕੇ ਉਹ ਕੀ ਕਰਦੀ ਵਰਬਾਣੀ ਅੱਖਾਂ ਹੀ ਖੋਲਦੀ ਹੈ ਔਰ ਕੀ ਕਰਦੀ ਨਹੀਂ ਦੱਸੋ ਨਹੀਂ ਦੱਸੋ ਧਿਆਨ ਰਹਿਣ ਬੈਣ ਗੁਰ ਕਰਪਾ ਤੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਉਸ ਸਤਗੁਰ ਦੀ ਗੱਲ ਹੈ ਬੇਟੇ ਜੇ ਬੇਟੇ ਤਾਂ ਇਹ ਵਿਵਸਥਾ ਹੋਵੇ ਜੇ ਸਤਗੁਰ ਬੇਟੇ ਤਾਂ ਬੁਰ ਕਿਰਪਾ ਹੋਵੇ ਤਾਂ ਹਰਮਨ ਬਸੇ ਤਾਂ ਅਮਰਤ ਬਾਣੀ ਬੋਲੇ ਇਹ ਪਿਟੇ ਨਾ ਤਾਂ ਸਾਰਾ ਕੁਝ ਕਿਵੇਂ ਹੋਵੇ ਜੇ ਸਕੂਲ ਜਾਵੇ ਨਾ ਤੇ ਪੜ੍ਹੇ ਕਿੱਥੋਂ ਸਤਗੁਰ ਮਿਲੇ ਕਿੱਥੋਂ ਸਤਗੁਰ ਕੇ ਜਨਮੇ ਤੋਂ ਉਟਾਏ ਸਤਗੁਰ ਕੇ ਜਨਮੇ ਤੋਂ ਉਟਾਏ ਨਾਲੋਂ ਬਿਨ ਸਤਗੁਰ ਭੇਟੇ ਜਗ ਇਹ ਸਤਗੁਰ ਦੇ ਵਿੱਚ ਇੱਕ ਵਲਕ ਨਹੀਂ ਹੁੰਦਾ ਉਹਨਾਂ ਦਾ ਜਨਮ ਨਹੀਂ ਹੁੰਦਾ ਸਤਗੁਰ ਦਾ ਸਤਗੁਰ ਦਾ ਜਨਮ ਇਹਦਾ ਹੀ ਜਨਮ ਹੈ ਹੂੰ ਸਤਗੁਰ ਦਾ ਜਨਮ ਜਨਮ ਬੁਲਾਦੇ ਜਿਹੜਾ ਸਤਗੁਰ ਦੇ ਇੱਕੋ ਦੇ ਜਨਮ ਹੋਣ ਇਹਦਾ ਜਨਮ ਸਤਗੁਰ ਦਾ ਜਨਮ ਦੋ ਕੋਈ ਅਸਲ ਸਤਗੁਰ ਦਾ ਜਨਮ ਦਾ ਇੱਕ ਹੋਰ ਆ ਸੱਚਾ ਗਿਆਨ ਅੰਦਰੋਂ ਪੈਦਾ ਹੁੰਦਾ ਜੇ ਤੇਰੇ ਅੰਦਰੋਂ ਪੈਦਾ ਹੁੰਦਾ ਸੱਚ ਦਾ ਗਿਆਨ ਸੱਚ ਦੀ ਸੋਚ ਅੰਦਰੋਂ ਪੈਦਾ ਹੋਣ ਲੱਗ ਜਾਂਦੀ ਹੈ ਸਤਿਗੁਰ ਦੇ ਜਨਮ ਲੈ ਮਤਲਬ ਹੈ ਅਸਲ ਦੇ ਵਿੱਚ ਕਿਤੇ ਕਹਿੰਦੇ ਹੋ ਪਤਾ ਨਹੀਂ ਕੋਈ ਦਰਖਤ ਪੈਦਾ ਹੋ ਜਾਂਦਾ ਅੰਦਰ ਕੁਝ ਨਹੀਂ ਹੁੰਦਾ ਆ ਜਿਹੜੀ ਧੁਰਕੀ ਬਾਣੀ ਆਈ ਹੈ ਨਾ ਨਾਨਕ ਕਹਿੰਦੇ ਅੰਦਰੋਂ ਸੋਚ ਹੀ ਪੈਦਾ ਹੋਈ ਹੈ ਜਿਹੜਾ ਉੱਤੋਂ ਪਾਣੀ ਪਾਉਂਦੇ ਸੀ ਨਾ ਬੋਰ ਕਰ ਨੂੰ ਥੱਲੇੋਂ ਨਿਕਲ ਲਗਿਆ ਉੱਥੇ ਚੱਲ ਗਿਆ ਜਿੱਥੇ ਥੱਲੇੋਂ ਫੁੱਟਣੇ ਹੁਣ ਬੋਰ ਆ ਉਨਾ ਡੀਪ ਸਮਝ ਚਲੀ ਗਈ ਉਨੀ ਸੋਚੀ ਗਹਿਰਾਈ ਚ ਚਲੀ ਗਈ ਜਿੱਥੋਂ ਆ ਕੇ ਪੱਤਣ ਆ ਗਿਆ ਆਪੇ ਗਿਆਨ ਸ਼ੁਰੂ ਹੋਣਾ ਹੈ ਅਰੇ ਆਪ ਬੱਬਲ ਪੂਸਾ ਪਾਇਆ ਹੈ ਕੀ ਵਿਦਵਾਨਾਂ ਦਾ ਜਿਹੜਾ ਬੱਬਲ ਪੂਸਾ ਪਾਇਆ ਹੈ ਪੱਤਣ ਦਾ ਬਨਵਤੀਆਂ ਦਾ ਇਹਦੀ ਸਾਰੇ ਦੀ ਸਮਝ ਆ ਗਈ ਇਹੋ ਜਿਹੜਾ ਦਾ ਹੱਲ ਹੋ ਗਿਆ ਜਿਹੜੀ ਗੁਰਜੀਤ ਸੁੱਝ ਗਈ ਜਿਹੜਾ ਚੜ ਉੜ ਜਾ ਹੈ ਸਮਝ ਨਹੀਂ ਸਕਦਾ ਚਾਹ ਤਾ ਉੜ ਜਾ ਸੁੱਝ ਨਹੀਂ ਜਾ ਸੁਣਜੇ ਹੋਏ ਕੋਲ ਬੈਠਿਆ ਸੁਣਜੇ ਨੇ ਸਮਝਾਇਆ ਹੁਣ ਸੁਣਜਾ ਹੈ ਸਾਡੇ ਕੋਲ ਕੋਈ ਸਾਡੇ ਕੋਲ ਤਾਂ ਆ ਸੁਣਜਾ ਹੈ ਬਸ ਹੋਰ ਕੁਝ ਨਹੀਂ ਸੁਣਜਾ ਹੈ ਸੁਣਜਾ ਹੈ ਦੀ ਗੱਲ ਹੈ ਸਾਡੇ ਕੋਲ ਸੁਣਜਾ ਦੀ ਵਿਧੀ ਹੈ ਵਿਧੀ ਹੈ ਕਿਵੇਂ ਸੁਝੀ ਜਾਏ ਵਿਧੀ ਲਿਖਤ ਵਿੱਚ ਹੈ ਲਿਖਤ ਵਿੱਚ ਹੁਣ ਲਿਖਤ ਨੂੰ ਸਹੀ ਸਮਝਣਾ ਸਮਝ ਲਾਂਗੇ ਸੁਝੇ ਜਾਾਂਗੇ ਨਹੀਂ ਤਾਂ ਹੋਰ ਉਲਝੇ ਜਾਂਦੇ ਇਹ ਗੱਲ ਸਮਝ ਲਿਆ ਏਸੇ ਲਿਖਤ ਨੂੰ ਗਲਤ ਸਮਝ ਕੇ ਹੋਰ ਉਲਝੇ ਗਏ ਲਿਖਤ ਇੱਕੋ ਹੀ ਹੈ ਲੇਕਿਨ ਅਸੀਂ ਉਹਨੂੰ ਸਮਝਿਆ ਕਿਹੜੇ ਰੂਪ ਚ ਉਲਝਣ ਵਾਲੇ ਰੂਪ ਸਮਝਿਆ ਸੁਝਣ ਵਾਲੇ ਰੂਪ ਵਿੱਚ ਸਹੀ ਸਮਝਿਆ ਤਾਂ ਸੁਝੀ ਜਾਾਂਗੇ ਜੇ ਗਲਤ ਸਮਝ ਲਿਆ ਉਹ ਜੀ ਗਲਤ ਸਮਝ ਕੇ ਹੋੜ ਜੇ ਇੱਕ ਅੱਖਰ ਨੂੰ ਨਾਮ ਹਲੇ ਵਾਇਗਰ ਅੱਖਰ ਨੇ ਇਹਨੂੰ ਨਾਮ ਹੁੰਦਾ ਬਾਣੀ ਕਹਿੰਦੇ ਅਖਰੀ ਨਾਮ ਅਖਰੀ ਸਾਲਾ ਲਿਖਿਆ ਹੋਇਆ ਵਾਇਗਰ ਦਾ ਦਰਸ਼ਨ ਹੁੰਦਾ ਹੁੰਦਾ ਕੋਣ ਕੀ लिख्या ਰਹੀ ਜਿੱਥੇ ਲਿਖਿਆ ਹੋਇਆ ਵੇ ਵੈਗ ਰੁਹ ਹੈ ਇਹ ਉਹਦਾ ਕਹਨ ਦੀ ਨਾ ਉਹਦਾ ਲਿਖਿਆ ਵੀ ਜਾ ਸਕਦਾ ਬਟਿਆ ਵੀ ਜਾ ਸਕਦਾ ਲੇਖਰ ਬੇਟਿਏ ਤਾਂ ਹੈ ਨਾ ਮਨ ਜਿਹੜਾ ਓੰਕਾਰ ਓੰਕਾਰ ਆਦਮੇ ਜਾਣਾ ਉਦੋਂ ਵੈਗ ਰੁਹ ਨਹੀਂ ਵਾਇਰ ਨੂੰ ਤਾਂ ਅਸੀਂ ਘੋੜ ਲਿਆ ਵਿੱਚ ਰੱਖ ਕੇ ਪਤਾ ਨਹੀਂ ਕਿਉਂ ਘੋੜ ਲਿਆ ਓਮਕਾਰ ਆਦ ਮੈਂ ਜਾਣਾਂ ਕਬੀਰ ਕਹਿੰਦਾ ਓਮ ਦੀ ਗੱਲ ਚਲਦੀ ਸੀ ਨਾ ਓਮਕਾਰ ਆਦ ਕੀ ਹੁੰਦਾ ਵਹਿ ਜਲ ਲਿਆ ਪਰ ਜਿਹੜਾ ਲਿਖ ਕੇ ਲਿਖ ਲਿਖ ਵਿੱਚ ਨਾ ਨਿਕਲ ਤਾਂ ਹਾਂ ਲਿਖਿਆ ਜਾ ਸਕਦਾ ਔਰ ਮਟਾਇਆ ਜਾ ਸਕਦਾ ਲਿਖਿਆ ਜੇ ਲਿਖਿਆ ਤਾਂ ਮਟਾਇਆ ਵੀ ਜਾ ਸਕਦਾ ਇਹ ਫੱਕਰ ਜਾਣੀ ਉਹ ਘਰ ਇਹ ਮੇਨਾ ਲੇਖਰ ਮੇਟੇ ਤਾਹੀ ਨਹੀਂ ਮਾਦਾ ਆ ਜਿਹੜਾ ਇਹਦੇ ਤੇ ਲਿਖਿਆ ਹੋਇਆ ਰੇਟੇ ਜਾ ਸਕਦੇ ਇਹਨੂੰ ਨਹੀਂ ਮੈਂ ਮੰਨਦਾ ਇਹਦਾ ਅੱਖਰ ਰੀ ਰੂਪ ਹੈ ਉਹਦਾ ਨਾ ਬੋਲਿਆ ਹੋਇਆ ਉਹ ਹੈ ਤੇ ਲਿਖਿਆ ਹੋਇਆ ਉਹ ਗੋੜ ਜਿਹੜਾ ਮੂਹ ਨਾਲ ਬੋਲ ਦਿੱਤਾ ਨਾ ਉਹ ਗੋੜਾ ਤੂੰ ਸੁਣ ਲਿਆ ਤੇ ਨਾ ਜਿਹੜਾ ਲਿਖਿਆ ਹੈ ਉਹ ਗੋੜਾ ਲੇ ਕੇ ਗੋੜ ਪਾ ਦੇ ਦੇਖ ਬਲ ਦੁੱਧ ਬਿਠਾਓ ਜੀ ਯਾਹ ਉਹ ਵਿੱਚ ਗੋੜ ਬੋਲੀ ਜਾ ਪਾਣੀ ਮਿਠਾ ਹੋ ਜੂ। ਉਹ ਹੀ ਤਾਂ ਕਹਿ ਰਿਹਾ ਉਹ ਖੰਡਾ ਫੇਰੀ ਜਾ ਪਾਣੀ ਪੜੀ ਜਾ ਮਿਠਾ ਹੋ ਜੂ ਨਾਮ ਬਾਦ। ਕਾਲਾ ਭਾਣਾ ਕਹਿ ਰਿਹਾ ਕਿਉਂ ਕਿ ਕਹਿ ਰਿਆ। ਤੇ ਢੇਲੇਗਾ ਬੜੀ ਜੁਚੰਤਾ ਹੋ ਜੂ। ਬਤਾ ਪਾਣੀ ਪੜਨਗੇ। ਜੇ ਨਾਮ ਸੀ ਮਿਠਾ ਹੁੰਦਾ ਫਿਰ ਠੀਕਾਂ ਦਾ ਸੀ ਉਹ ਪਾਣੀ ਮਿਠਾ ਹੋ ਜਾਂਦਾ ਜਾਈਦਾ। ਤੇ ਠੀਕਾ ਦਾ ਸੀ ਉਹ। ਜੇ ਬੋਲਿਆ ਹੋਇਆ ਵੈਗਰੂ ਨਾਮ ਹੈ ਤਾਂ ਮਿੱਠਾ ਹੋਣਾ ਚਾਹੀਦਾ ਸੀ ਉਹ। ਪਾਣੀ। ਇਹ ਤਾਂ ਮਿੱਠਾ ਹੋ ਜਾਣਾ ਚਾਹੀਦਾ। ਬੋਲਿਆ ਹੋਇਆ ਨਾਮ ਹੀ ਨਹੀਂ ਹੈ, ਮਿਠਾਈ ਹੀ ਨਹੀਂ। ਕੌੜਾ ਹੋ ਤੋ। ਮਰੂ ਘਾਵਾ ਤੇ ਕੌੜਾ ਹੁੰਦਾ। ਇਹ ਗੁਰਤਬਸਤੂ ਦਾ ਨਾਮ ਨਹੀਂ ਹੈ। ਗੁਰਤਬਸਤੂ ਦਾ ਨਾਮ ਹੈ। ਵਸਤੂ ਵਸਤੂ ਗਿਆਨ ਹੈ। ਦਿੱਤਾ ਕੋਈ ਗੱਲ ਤੋਂ ਦਿੱਤੀ ਜਾ ਸਕਦੀ ਹੈ ਉਹ ਲਈ ਜਾ ਸਕਦੀ ਹੈ ਜਿਹੜਾ ਮੂੰਹ ਨਾਲ ਬੋਲਿਆ ਉਹ ਦੱਸਿਆ ਦਿੱਤਾ ਨਹੀਂ ਉਹ ਉਪਦੇਸ਼ ਰੂਪ ਵਿੱਚ ਹੀ ਦਿੱਤਾ ਕਹਿੰਦੇ ਆਂ ਵੈਸੇ ਕਹਿ ਦਿਆ ਦਿੱਤਾ ਉਪਦੇਸ਼ ਚੋਂ ਜੋ ਗਿਆਨ ਬਣਦਾ ਉਹ ਸਾਡੇ ਪੱਲੇ ਰਹਿੰਦਾ ਉਪਦੇਸ਼ ਦਿੱਤਾ ਜਾ ਸਕਦਾ ਉਹਦੇ ਵਿੱਚ ਦੀ ਕੁਝ ਦਿੱਤਾ ਸੀ ਹਵਾ ਆਈ ਨੇ ਆਈ ਕੁਝ ਦੇ ਸਾਨੂੰ ਕੀ ਮਿੱਟੀ ਇਸ਼ੇ ਤੇ ਜੰਮੂਗੀ ਦਿਵਾਰਾਂ ਤੇ ਜੰਮੂਗੀ ਪੇੜਾਂ ਪੌਦਿਆਂ ਤੇ ਜੰਮੂਗੀ ਬੰਦਿਆਂ ਦੇ ਉੱਤੇ ਜੰਮੂਗੀ ਦੇਗੀ ਨਾ ਕੋਈ ਹਵਾ ਨਾ ਗਈ ਮਿੱਟੀ ਛੱਡ ਗਈ ਉਪਦੇਸ਼ ਮੁੰਡਾ ਕਹਾ ਬੋਲ ਨਿਕਲ ਜਾਂਦਾ ਪਰ ਕੁਝ ਗਿਆਨ ਦੇ ਜਾਂਦਾ ਸਾਨੂੰ ਸੋਝੀ ਦੇ ਜਾਂਦਾ ਸਮਝ ਦੇ ਜਾਂਦਾ ਕੁਝ ਜੋ ਸਮਝ ਦੇ ਗਿਆ ਉਹ ਸਾਡੇ ਪਿੱਛੇ ਰਹੇਗੀ ਗੱਲ ਗੱਲ ਹੁਣ ਉਪਦੇਸ਼ ਨੂੰ ਸਮਝਣ ਦੀ ਗੱਲ ਹੈ ਉਪਦੇਸ਼ ਸਮਝੇ ਤਾਂ ਜੋ ਪ੍ਰਾਪਤ ਹੋਇਆ ਉਹ ਨਾ ਹੁੰਦੀ। ਕੁਰਬਾਨੀ ਨੇ जो ਦੱਸਿਆ ਸਾਨੂੰ ਉਪਦੇਸ਼ ਕੀਤਾ ਹੈ ਇਹ ਜੋ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦਾ ਸੀ ਉਹ ਹੂ ਬੂ ਗੱਲ ਸਮਝ ਲਈ। ਫਿਰ ਤਾਂ ਨਾਮ ਅਸੀਂ ਉਹ ਲੈ ਲਿਆ ਸਾਨੂੰ ਮਿਲ ਗਿਆ। ਤੇ ਨਹੀਂ ਤਾਂ क्या ਦਾ ਕਿਆ ਬੋਲ ਸੀ ਨਿਕਲ ਗਿਆ। ਜੇ ਉਲਟ ਸਮਝ ਲਿਆ ਤਾਂ ਘੜਿਆ ਤੇ ਕੀ ਹੋਗੀ। ਬਾਤ ਨੂੰ ਤਾਂ ਕੀ ਹੋਗੀ। ਜੇ ਇਹ ਨਹੀਂ ਗੱਲ ਕਰਦੇ ਜਿਹੜੇ ਉਹ ਬਾਹਰੋਂ ਨਿੱਕੀ ਗੱਲ ਹੈ ਬਰੀਕ ਗੱਲ ਹੈ ਬੰਦੇ ਕਹਿੰਦੇ ਕਿ ਇਸ ਕਰਕੇ ਹੈ ਉਹ ਵੀ ਬਰੀਕੇ ਹੁੰਦੀ ਹੈ ਪ੍ਰਾਤ ਨੂੰ ਕਰਤੀ ਵੀ ਹੈ ਗਲਤ ਸਮਝ ਰਹਾ ਆ ਵੀ ਹੈ ਰਸਤਾ ਸੀ ਹੋਰ ਬਣਨ ਮਨ ਲਿਆਣਾ ਵੀ ਹੀ ਘਰ ਤੇ ਜਾ ਰਹੇ ਨਾ ਵਾਇਰੂ ਕਰਨ ਕਹਿਣ ਵਾਲੇ ਆਪਣੇ ਆਪ ਮੰਨ ਕੇ ਚੱਲ ਜਾਂਦੇ ਅਸੀਂ ਨਾਉਂ ਜਪ ਰਹੇ ਹਾਂ ਉਹਨਾਂ ਜੀਵਨ ਗਰਾਹ ਹੋ ਗਏ ਉਹਨਾਂ ਦਾ ਦੋਸਤ ਨਹੀਂ ਦੋਸਤ ਕਹਿਣ ਵਾਲਿਆ ਬੰਦਾ ਉਹ ਮਨ ਕਈ ਚੱਲਣ ਉਹਨੂੰ ਕਬੀਰ ਵਾਲਾ ਫਿਰਦਾ ਮਨ ਕਈ ਕਰਦਾ ਉਹਨੇ ਮਨ ਜਿਦਾ ਕੋਈ ਉਪਾਅ ਕੋ ਨਹੀਂ ਹੈਗਾ ਉਹ ਤਾਂ ਆਪਣੀਆਂ ਨੇ ਮੰਦਾ ਨਾ ਦਾਨੇ ਨੇ ਕਹਿੰਦਾ ਸਾਥ ਸੂ ਤੇ ਖੋਏ ਮੁੰਡੀਆਂ ਕਿਉਂ ਨਾ ਹੋਏ ਮੇਰਾ ਤਾਂ ਮੈਂ ਬਿਲਕੁਲ ਸਭ ਕੁਝ ਛੱਡ ਕੇ ਘਰ ਆਇਆ ਸੀ ਫਿਰ ਮੇਰੇ ਵੱਲ ਇਤਹਾਸ ਕਿਉਂ ਨਹੀਂ ਪਿਆ ਵਾਲਾ ਕਹਿਦਾ ਕੀ ਹੈ असर की पेंडा गलत रास्ते चल रहया सी बाळा थियो थी। नी हो ताहिं वाला दी डेफिनेशन बदलदा हो कबीर मेरी स्मरणी असणा ऊपर रो बाळा इ बदलती वे बाळा इ नी के नाम में रह गया जे बाळा ना रही राम के में रह गया जे बाळा ना रही बाळा ना जपण वाला राम गलत सी कहदा राम में पेहले है जे बाळा ठीक हो नी राम भी ठीक होंदा ਨਾਉ ਰਾਮ ਰਾਮ ਜੀ ਜਿਹੜਾ ਵਾਲਾ ਨੇ ਜਪਦਾ ਸੀ ਨਾ ਉਹ ਵਾਲਾ ਵਾਲਾ ਸੀ ਜੀ ਸਿਵਰ ਨਹੀਂ ਸੀ ਜਿਹੜੀ ਉਹ ਫੇਰਦਾ ਸੀ ਵਾਲਾ ਨੂੰ ਸਿਵਰ ਨਹੀਂ ਕਹਤਾ ਮਾਣ ਨਾ ਤਾਂ ਜਦ ਜਦ ਤੇ ਮੜਾ ਲਈ ਨਪੁੱਤੇ ਪਿਓ ਉਹੀ ਸਾਡੇ ਨਾਲ ਹੋ ਰਿਹਾ ਇੰਨਾ ਕੁਛ ਕਬੀਰ ਨੇ ਲਿਖਿਆ ਕਿ ਮੈਂ ਧੋਖਾ ਖਾ ਗਿਆ ਅਸੀਂ ਸਾਰੇ ਧੋਖਾ ਖਾਂਦੇ ਹੋਈ ਫਿਰ ਕਿਉਂਕਿ ਕਵੀਰ ਨੂੰ ਜੇ ਪੜ ਲੈਂਦੇ ਧੋਖਾ ਨਹੀਂ ਦਿੱਤਾ ਉਹ। ਉਹ ਇਹਦਾ ਕਵੀਰ ਛੱਡਦਾ। ਕਵੀਰ ਛੱਡ। ਜਿਹਨੇ ਧੋਖਾ ਖਾਦਾ ਸੀ ਜਿਹੜਾ ਆਪਣੀ ਦੱਸ ਕੇ ਗਿਆ ਵੀ ਮੈਨੂੰ ਭਾਈ ਧੋਖਾ ਹੋ ਗਿਆ ਸੀ। ਉਹ ਕਹਾਣੀ ਛੱਡਦੀ ਪੜ੍ਹਦੀ। ਉਹਦੇ ਨਾਲ ਕਹਾਣੀਆਂ ਜੋੜੀਆਂ ਹੋਈਆਂ ਸੱਚ ਬਣਾਲੀਆਂ ਵੀ ਫਲਾਡੇ ਦਾ ਚੇਲਾ ਸੀ ਤੁੰਗੀ। ਉਹ ਜਿਹੜਾ ਆਦਮੀ ਜਿਹਦਾ ਚੇਲਾ ਸੀ ਉਦੈ ਇੱਕ ਹਮਦਰ ਗੁਰਬਾਣੀ ਉਹ ਉਸ ਵਿਚਾਰਧਾਰਾ ਦੇ ਖਿਲਾਫ ਹੈ ਜਿਹਨੂੰ ਪਹਿਲਾਂ ਮੰਨਦਾ ਸੀ ਉਹਨਾ ਹੀ ਹਮ ਨੂੰ ਸਾਬਤ ਕਰਦਾ ਵੀ ਉਹ ਵਿਚਾਰਧਾਰਾ ਗਲਤ ਸੀ ਜਿਹੜੀ ਮੇਰੀ ਪਹਿਲੀ ਸੀ ਸਿਰਫ ਕੋਈ ਸ਼ਬਦ ਉਹ ਇਹੀ ਕਹਿੰਦਾ ਐਦ ਦੇਪਸ ਪਰ ਮਨ ਪੇ ਹੋ ਅਮੰਦੋ ਕਾਜ ਚੋਆ ਬਹੁਤ ਸੁਗੰਧ ਪੂਜਣ ਚੱਲਦੀ ਬ੍ਰਹਮਾ ਪਰ ਤੱਕਨ ਕੋਲ ਪ੍ਰਭੂ ਕਦਾਇਓ ਬਣੀ ਗਾਇ ਥਾਲੀ ਰੱਖੀ ਫੇਰ ਉਹ ਸੁਭਾ ਜਿਹੜਾ ਬੜਿਆ ਹੋਇਆ ਸੀ ਮੰਦਿਰ ਜਾ ਕੇ ਮੰਦਿਰ ਜਾ ਕੇ ਉੱਥੇ ਚਲੀ ਗਏ ਥਾਲੀ ਲੈ ਕੇ ਫੇਰ ਉਹ ਜਾ ਗਿਆ ਇੱਕਦਮ ਉਹ ਸੁਭਾ ਬੜਿਆ ਹੋਇਆ ਸੀ ਨਾ ਜੇ ਥਾਲੀ ਚੱਕ ਲਈ ਫਿਰ ਕਹਿੰਦਾ ਗੁਰ ਪ੍ਰਭੂ ਕਦਾਇਓ ਬਣੀ ਮੈਂ ਮੈਨੂੰ ਤਾਂ ਦੱਸਿਆ ਸੀ ਬੰਦ ਵਿੱਚ ਆ ਤੂੰ ਵੇਲੋ ਹੀ ਕਰੂ ਗੱਲ ਆ ਗਿਆ ਥਾਲੀ ਰੱਖ ਉਹਦਾ ਸੋ ਕਬੀਰ ਤੇ ਕਹੇ ਤੇ ਉਹਨੇ ਲੈ ਲ ਲਈ ਫੇਰ ਕਬੀਰ ਰੋਸ ਨਾਲ ਚਿਲਾ ਕਰੀ ਗਿਆ ਡੋਲੋੜੇ ਕਰੀਆ ਰਾਮ ਕਹਿਣ ਦੇ ਭੇਜਦਾ ਤਾ ਵਹ ਇੱਕ ਵਿਚਾਰ ਇਹ ਤਰਾਉ ਨੂੰ ਸਭਾ ਕਹ ਰਾਮ ਰਾਮ ਦਾ ਗਰੀਬ ਹੀ ਜਾਂਦਾ ਇਹ ਕੋਤਰ ਕਹਾਰ ਇਤਰਾਮ ਐਸਾ ਜਿਹੜਾ ਕੋਤਰ ਕਰਦਾ ਕੋਤਰ ਕੀ ਕਰਦਾ ਮਨ ਬਦਲਦਾ ਬੁੱਧ ਬੁੱਧ ਰਾਮ ਕਹ ਰਾਮ ਬਾਰੇ ਕੁਝ ਪਿਆ ਹੈ ਜਿਹਦੇ ਰਾਮ ਬਾਰੇ ਕੁਝ ਦੱਸਿਆ ਰਾਮ ਇਹ ਹੈ ਅਸਲ ਉਸ ਵੇਖਾ ਕੱਟਣਾ ਬੋਲੇ ਜਿਹੜਾ ਨਾ ਉਹਦੀ ਗੱਲ ਰਾਮ ਕਥਾ ਦੀ ਗੱਲ ਹੈ ਰਾਮ ਨੂੰ ਕਥਾ ਕਰਨਾ, ਰਾਮ ਨੂੰ ਕਥਾ ਕਰਨਾ ਹਰਕੀਕਤ ਹੈ। ਰਾਮ ਦੀ ਕਥਾ ਹਰਕੀਕਤ ਹੈ। ਹਰ ਕੀ ਕਥਾ ਕਹਣੀਆ ਸੁਣਈਆ ਜਿਹੜੀ ਗੁਰਬਾਣੀ ਹੈ ਹਕੀਕਤ ਹੈਗੀ। ਇੱਕ ਐਣਾ ਭੇਡ ਔਖਾ। ਗੁਰਬਾਣੀ ਦਾ ਕਸਮ ਕਰਨਾ ਔਖਾ ਹੈ, ਰਾਮ ਇਹ ਕਿਹਾ ਹੋਇਆ ਸਾਰਾ। ਨਾਲਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਦੇ ਕਾਰਨ ਕੋ ਮਾਇ ਸਿਰ ਸਤਗੁਰੂ ਭੇਟੇ ਸਤਗੁਰੂ ਰਾਮ ਨੇ ਕਿਹਾ ਉਸੇ ਨੂੰ ਇਹਦਾ ਸਤਗੁਰੂ ਅੰਦਰ ਲੈ ਫਿਰ ਇਹ ਸਤਗੁਰੂ ਜਿਹੜੇ ਭੇਟਣਾ ਉਹ ਕੌਣ ਜਿਹੜਾ ਜਿਹੜਾ ਜੂਨੀਅਨ ਚੋਂ ਭੇਟਣਾ ਭੇਟਣਾ ਜਿੱਤ ਨੂੰ ਜਿਹੜਾ ਹੰਕਾਰੀ ਹੈ ਉਹ 버 ਹੈ ਜਿਹੜਾ ਹੰਕਾਰ ਤਿਆਗੀ ਹੈ ਉਹ ਚਿਤ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਦੇ ਹਕੂਮਤੋਂ ਦੀਵਾ ਸਮਝਦਾ ਉਹ ਪੱਖ ਉਪਾਸਾ ਇਹ ਆਵਾਦਾ ਚਿਤ ਉਹ ਸਤੁਰ ਖਾਸ ਉਹਦੀ ਬਰਾਬਰੀ ਨਹੀਂ ਕਰਦਾ ਉਹ ਸਤੁਰ ਉਹ ਦਾ ਅਨੁਸਾਰੀ ਹੈ ਉਹਦੇ ਪਾਣੀ ਚ ਰਹਿ ਕੇ ਖੁਸ਼ ਹੈ ਤੇ ਜਿਹੜਾ ਪਾਣੀ ਚ ਰਹਿ ਕੇ ਖੁਸ਼ ਨਹੀਂ ਹੈ ਆਪਣਾ ਉਸ ਸੰਸਾਰ ਤੇ ਚਲਣਾ ਚਾਹੁੰਦਾ ਆਪ ਰਾਜਾ ਬਣਨਾ ਚਾਹੁੰਦਾ ਆਪ ਬੜਾ ਬਣਨਾ ਚਾਹੁੰਦਾ ਹੈ ਆਪ ਧਨਵਾਨ ਬਣਨਾ ਚਾਹੁੰਦਾ ਹੈ ਆਪ ਗੁਰੂ ਬਣਨਾ ਚਾਹੁੰਦਾ ਹੈ ਉਹ ਬਣ ਤੇ ਬੜਾ ਬਣ ਵਿੱਚ ਸੁਖ ਨਹੀਂ ਹੈ ਬੜਾ ਬਣ ਵਿੱਚ ਵੀ ਸੁਖ ਨਹੀਂ ਬੜਾ ਬਣਨ ਵਾਸਤੇ ਯਤਨ ਕਰਨੇ ਵੀ ਦੁੱਖ ਰੂਪੇ ਸੁੱਖ ਨਹੀਂ ਯਤਨ ਕਰਦਾ ਨਾ ਬੜਾ ਬਜਾ ਬਣੂ ਜਾਂ ਬਣੂ ਯਤਨ ਤਾਂ ਸਾਹੇ ਕਰਦੇ ਜੀ ਇਹ ਗਲਤ ਦਿਸ਼ਾ ਆਗਦੇ ਨੇੜੇ ਦੀ ਜਾਣ ਵਾਲੀ ਗੱਲ ਹੈ ਅਗਰ ਸਾਦਰ ਦੇ ਵਿੱਚ ਦੀ ਜਾਣ ਵਾਲੀ ਗੱਲ ਜਿੰਨਾ ਜ਼ਿਆਦਾ ਜਾਊਗਾ ਉਹਨੇ ਜ਼ਿਆਦਾ ਜਿੰਨਾ ਛੋਟਾ ਰਹੂਗਾ ਉਹਨਾ ਸੋਖਾ ਰਹੂਗਾ ਸੋਖਾ ਰਹੂਗਾ ਛੋਟਾ ਰਹੂ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਈ ਅੰਦੇ ਕਰਮ ਅੰਦੇ ਕਰਮ ਕੋ ਜੋ ਅੰਦੇ ਕਰਮ ਕਰ ਰਹੇ ਸੀ ਸਭ ਤੋਂ ਵੱਡਾ ਹੋਣ ਦੀ ਇੱਛਾ ਇਹਨੂੰ ਚਾਹੀਦੀ ਹੈ ਦੇ ਅੰਦਰ ਪਰ ਹੋਣਾ ਕਿਵੇਂ ਹੈ ਹੋਣਾ ਕਿਵੇਂ ਇਹ ਆਪਣਾ ਆਪ ਵਟਾ ਚਾਹ ਆਹ ਉਹਨੇ ਲੋਟੇ ਆਇਆ ਜੀ ਇਹ ਸਤ ਗੁਰੂ ਦਾ ਵਿੱਚ ਲੀਨ ਰੋਜ ਵਿੱਚ ਸਭ ਤੋਂ ਵੱਡਾ ਹੈ ਸਤ ਗੁਰੂ ਤੋਂ ਵੱਡਾ ਕੋਈ ਹੁੰਦਾ ਹੀ ਨਹੀਂ ਸੰਸਾਰ 'ਚ ਜਿੰਨਾ ਜਿੰਨ ਰੁਪਇਆ ਵਾਰ ਪਿਆ ਉਹਦੇ ਵਾਂ ਕੋਈ ਗੋਲ ਸੁਖ ਇੱਕੋ ਹੀ ਅੰਤ ਹੈ ਜੇ ਉਹ ਖਜ਼ਾਨੇ 'ਚ ਡਿੱਪੇ ਖਜ਼ਾਨਾ ਬਣ ਗਿਆ ਜੇ ਜਿਉ ਖਜ਼ਾਨੇ ਦੀ ਜਿੱਤ ਉਹ ਜੀ ਵਿੱਚ ਇਹਦੀ ਹੋਣੀ ਰੇਈ ਦਾ ਗੱਲਾ ਪਿਆ ਕੱਲਾ ਖਜ਼ਾਨਾ ਬਣ ਜੂ ਕਦੇ ਨਹੀਂ ਬਣਦਾ ਇਹ ਜਾਨੇ ਪੈ ਕੇ ਕਿੱਦਾਂ ਬਣੂ ਇਹ ਆਪਣੇ ਨਾਲ ਇਨੇ ਬੰਦੇ ਜੋੜ ਲੂ ਜਿਹਨੇ ਸਾਥ ਖਾਣੇ ਜੁੜਨੇ ਹੋਈ ਨਹੀਂ ਸਕੋ ਇਹ ਵੀ ਉਪਰ ਦਾ ਕਦੇ ਨਹੀਂ ਜਿੰਨੇ ਉਹ ਜੁੜੇ ਬੈਠੇ ਨੇ ਇੱਕ ਮਤ ਹੋਇਆ ਕਦੇ ਜੀ ਜੋੜ ਸਕਦਾ ਕਿੱਡਾ ਹੀ ਨਾਲ ਚੱਲੇ ਸਭ ਕੋਏ ਦਰਨ ਦੀ ਕੋਸ਼ਿਸ਼ ਕੀਤੀ ਜਾਨੀ ਹਾਂ ਨੇ ਆਪਣੇ ਮਗਰ ਲਾਏ ਨੇ ਵੀ ਮੇਰੇ ਕਹਣੇ ਜੈਨੇ ਨੇ ਮੇਰੇ ਨੇ ਕਬੀਰ ਚੱਲੇ ਤੇ ਚੱਲੇ ਤੇ ਹਰ ਮਨੋ ਕੋ ਵਿਚੇ ਢਕ ਗਿਆ ਜੀਤ ਸੀ ਹੋ ਗਿਆ ਹੰਕਾਰੀ ਕੰਪੀਟੀਸ਼ਨ ਹੋ ਗਿਆ ਸੰਤਾਂ ਦਾ ਸਵਿਚੀ ਇਹਦੇ ਜਿਹਲੇ ਇਹਨੇ ਮੇਰੇ ਇਹਦੇ ਡੇਰੇ ਇਹਨੇ ਮੇਰੇ ਲੇ ਕੰਪੀਟੀਸ਼ਨ ਹੋ ਗਿਆ ਸ਼ਬਦ ਹੈ ਸੋ ਚਤਨਾ ਲਾਵਈ ਜਿਤ ਸੁਖ ਬਸਰ ਹਰ ਮੋੜ ਤੇ ਕਬੀਰ ਦਾ ਸ਼ਲੋਕ ਤੁਹਾਨੂੰ ਮਿਲ ਜੂਗਾ ਹਰ ਮੋੜ ਤੇ ਤੁਹਾਨੂੰ ਕਬੀਰ ਦਾ ਕੋਈ ਨਾ ਕੋਈ ਪੰਕਤੀ ਮਿਲ ਜੂਗੀ ਪੂਰੀ ਫਲਸਫੀ ਹੈ ਹਾਂ ਬੇਅੱਕਗਿਤੀ ਤਦ ਇਹੋ ਸੋਖਾ ਕੀਤਾ ਕਹਿਣ ਨੂੰ ਭੇਜਦਾ ਦੀ ਵਿਆਖਿਆ ਕੀਤੀ। ਇਸ ਵੀਰ ਦਾ ਬਾਤ ਹਾਂ ਰਾਮ ਰਾਮ ਰਾਮ ਦਾ ਸਾਰਾ ਜੱਗ ਹੀ ਕਰਦਾ ਫਿਰਦਾ। ਰਾਮ ਦੀ ਪ੍ਰਾਪਤੀ ਵੀ ਹੋਈ ਹੈ ਕਿਸੇ ਨੂੰ। ਜਿਵੇਂ ਉਹ ਵਾਹਿਗੁਰੂ ਵਾਹਿਗੁਰੂ ਕਰਦਾ। ਹੁੰਦਾ ਕੀ ਹੈ? ਤਖ ਜੇ ਅਸੀਂ ਵਾਇਗਰ ਨੂੰ ਨਾਮ ਮੰਨ ਲਈਏ ਨੋ ਸਤ ਨਾਮ ਤੇਰਾ ਪਰਬੂਰਗੁਲਾ ਸਤ ਨਾਮ ਤੇ ਬਿਗੈਰ ਪ੍ਰ ਇਹ ਤਾਂ ਨਹੀਂ ਵਾਇਗਰੂ ਤਾਂ ਨਹੀਂ ਹੈ ਪ੍ਰਬੂਰਗੁਲਾ ਸਤ ਨਾਮ ਪਰਬੂਰਗੁਲਾ ਲਿਖੇ ਇਹਦਾ ਉਹਦਾ ਵਾਇਗਰੂ ਗੁਣ ਵਾਚ ਕਰਾਉਣਾ ਕਰਤਬ ਨਾਮ ਦਰੇ ਕਰੇ ਤੇਰੇ ਜੀ ਜੇ ਕਰਤਬ ਨਾਮ ਕਰਤਨ ਨਾਮ ਝਾਗਿਆ ਨਾ ਕਿਰਤਨ ਕਿਰਤਮ ਨਾਮ ਕੋਣ ਵਚਕ ਨਾ ਹੁੰਦਾ ਇਹਦਾ ਅਰਥ ਹੁੰਦਾ ਤਾਂ ਵਾਇਰੂ ਦਾ ਵੀ ਅਰਥ ਹੈ ਕੋਈ ਵਾਹਿ ਦਾ ਬਤਰ ਹੁੰਦਾ ਬੜਿਆਈ ਬਸਵਾਦ ਵਾਚਨੀ ਹੈ ਗਲਤ ਗੱਲ ਹੈ ਬੜਿਆਈ ਬਸਵਾਦ ਵਾਚਨੀ ਬੜਿਆਈ ਬਾਵਾ ਕੇ ਜਦੀ ਕਰਨੀ ਬੜਿਆਈ ਗੁਰੂ ਹੈ ਗੁਰੂ ਦੀ ਵੜਿਆਈ ਗੁਰਬਾਣੀ ਗੁਰੂ ਦੀ ਵੜਿਆਈ ਹੋਈ ਹੈ ਵਾਹ ਵਾਹ ਬਾਣੀ ਨਰੰਕਾਰ ਇਹ ਆ ਜਿਹੜੀ ਬਾਣੀ ਰਚਾਰਦੀ ਉਹਦੀ ਵੜਿਆਈ ਹੋਈ ਹੈ ਇਹਦਾ ਅਰਥ ਹੈ ਬਾਣੀ ਰਚਾਰ ਕਰ ਤਉ ਹੋਰ ਹੈ ਬਾਣੀ ਉਹਦੀ ਵੜਿਆਈ ਹੈ ਨਰੰਕਾਰ ਦੀ ਜਿਹੜੀ ਗੁਰਬਾਣੀ ਹੈ ਉਸੇ ਦੀ ਵੜਿਆਈ ਹੈ ਨਰੰਕਾਰ ਦੀ ਵਾਹ ਵਾਹ ਉਹਦੀ ਨਿਰਗਾਰ ਦੇ ਵਾਹ ਵਾਹ ਹੈ ਵਡਿਆਈ ਹੋ ਹੈ ਜਿੱਤੇ ਜੇ ਵੱਡਾ ਵੱਲ ਕੋਈ ਇਸ ਕਰਕੇ ਇਹ ਵੱਡਾ ਇਹਦੇ ਬਰਾਬਰ ਕੋਈ ਨਹੀਂ ਹੈ ਕਿਉਂਕਿ ਉਹਦੀ ਵਡਿਆਈ ਨਿਰਗਾਰ ਦੀ ਬਾਕੀ ਸਾਰੀ ਵਡਿਆਈ ਮਾਇਆ ਦੀ ਹੈ ਜਿਹੜੀ ਮਾਇਆ ਦੀ ਵਡਿਆਈ ਹੁੰਦੀ ਹੈ ਉਹ ਨਿਰਗਾਰ ਦੀ ਵਡਿਆਈ ਦੇ ਬਰਾਬਰ ਨਹੀਂ ਹੋ ਸਕਦੀ ਨਿਰਗਾਰ ਦੇ ਰਾਤ ਆਰ ਸਤਿ ਸਰੂਪ ਝੂਠਦੀ ਵਡਿਆਈ ਵੀ ਝੂਠੀ ਸੱਚ ਦੀ ਵਡਿਆਈ ਵੀ ਸੱਚੀ ਸੱਚ ਦੀ ਵਡਿਆਈ ਸੱਚੀ ਝੂਠਦੀ ਵਡਿਆਈ ਝੂਠੀ ਮਿੱਟੀ ਦਾ ਬਣਿਆ ਖਡੌਣਾ ਮਿੱਟੀ ਦਾ ਸੋਨੇ ਦਾ ਬਣਿਆ ਖਡੌਣਾ ਸੋਨੇ ਦਾ ਝੂਠ ਦੀ ਵਡਿਆਈ ਕਰੋਗੇ ਅੱਜ ਕਿਸੇ ਜਾਣੇ ਦੀ ਵਡਿਆਈ ਕਰੀ ਆਪਾਂ ਬੜਾ ਸੁੰਦਰ ਹੈ ਘੱਡਾ ਘੱਡਾ ਰਹੋ ਬੱਚੇ ਰਹੋ ਅੱਛਾ ਵੱਡਾ ਹੋ ਜਾਣਾ ਉਹ ਰਹਿਣੀ ਨਹੀਂ ਉਹ ਛੱਕਣ ਨਹੀਂ ਰਹਿਣੀ ਨਹੀਂ ਰਹਿਣੀ ਵੱਡਾਈ ਛੁਟੀ ਹੋ ਜਾਂਦੀ ਦੇਖਣਾ ਉਹਦਾ ਵੱਡਾ ਹੋਇਆ ਦਾੜ੍ਹੀ ਆਈ ਦਾ ਉਹਨੇ ਛੋਡੇ ਦਾ ਰੂਪ ਵਾਲੀ ਬੜਾਈ ਨਹੀਂ ਬਣਦਾ ਬੰਦਾ ਫਬਰਾ ਕੀ ਦਿਓ ਇਹਦੀ ਦਾ ਹੈ ਸਾਹਮਣੇ ਉਹਨੇ ਕਿਹੜਾ ਦੇਖਿਆ ਤਾਂ ਕਿ ਅਸੀਂ ਬਾਣੀ ਨੂੰ ਕਿਉਂ ਨਹੀਂ ਮੰਨਦੇ ਅਜੀ ਕਿਹੜਾ ਜੋ ਦੇਖਿਆ ਜਿਹਦੀ ਵੜਾਈ ਤੇ ਕਿਹਦਾ ਸੱਚ ਬੰਦੋਂਗੇ ਸ਼ਬਦੈ ਸਿਉ ਚਿਤਨਾ ਲਾਵਈ ਜਿਤ ਸੁਖ ਵਸੈ ਮਨ ਆਇ ਸ਼ਬਦੈ ਸਿਉ ਚਿਤਨਾ ਲਾਵਈ ਉਹ ਉਸ ਉਪਦੇਸ ਨੂੰ ਚਿਤ ਨਹੀਂ ਲਾਉਦਾ ਸੰਸਾਰ ਉਹ ਸਬਦੇਸ਼ ਨੂੰ ਅੰਦਰੋਂ ਨਹੀਂ ਮੰਨਦਾ ਚਿੱਤ ਨਾਲ 라ਵੀ ਦਾ ਅੰਦਰੋਂ ਉਹ ਲੋੜ ਬਾਰੋਂ ਬੰਨ ਲੋ ਵਰਗਾ ਚਿੱਤ ਕਰਕੇ ਬੋਲਣਾ ਚਾਹੇ ਤੇ ਲਾਉਣਾ ਕਹਿੰਦਾ ਦਿਲ ਨਾਲ ਲਾ ਤੂੰ ਗੱਲ ਕਹਿੰਦੇ ਹੂੰ ਦਿਲੋਂ ਨਾਲ ਇਹ ਜਿਹੜੀ ਗੱਲ ਹੁੰਦੀ ਹੈ ਨਾ ਉਹ ਪਰੇਸ਼ਾਨ ਕਰਦੀ ਗੁਰਬਾਣੀ ਵੀ ਉਹਨਾਂ ਨੂੰ ਪਰੇਸ਼ਾਨ ਕਰਦੀ ਹੈ ਜਿਨ੍ਹਾਂ ਦੇ ਦਿਲੋਂ ਲੰਦੀ ਹੈ ਡੈਰੀ ਪਰੇਸ਼ਾਨ ਕਰਦੀ ਹਾਂਜੀ ਪਰੇਸ਼ਾਨ ਕੀ ਕਰਨਾ ਜਾਗਣਾ ਦਿਲੇ ਨਹੀਂ ਲੱਗੀ ਉਹ ਬੰਦਾ ਹੀ ਨਹੀਂ ਆਉਂਦਾ ਬੰਦਾ ਕਹਿੰਦਾ ਨਹੀਂ ਆਉਂਦਾ ਨਹੀਂ ਲੱਗਦੀ ਨਹੀਂ ਬੰਦਾ ਦੇ ਲਈ ਲੱਗਦੀ ਇਹ ਗੱਲ ਸੁਣਣ ਵੇਲੇ ਮਾਨ ਕਰਕੇ ਸੁਣਦਾ ਜਾਂ ਚਿਤ ਕਰਕੇ ਸੁਣਦਾ ਹੀ ਨਹੀਂ ਅਸੀਂ ਤਾਂ ਮਾਨ ਕਰਕੇ ਸੁਣਦੇ ਆ ਬੜੀ ਬੰਦਾ ਆਪਣੇ ਮਗਰੋਂ ਦੀ ਚੀਜ਼ ਸੁਣਦਾ ਬਾਕੀ ਸੁਣਦਾ ਹੀ ਨਹੀਂ ਸਰਦਾਰੀ ਨਿਆਣੇ ਦੇ ਬੋਚੀਸ ਬਾਦਾਂ ਜਿਹੜੀ ਨੂੰ ਸਾਦ ਲੂ ਖਾਲੂਗਾ ਨਹੀਂ ਤੋ ਤੂੰ ਬੰ ਤੋਕ ਦਿੰਦਾ ਨਾਲ ਦੀ ਨਾਲੇ ਧੁੱੱਕੀ ਜਾਂਦਾ ਹੁੰਦਾ ਤਾਂ ਗੱਲ ਮਨ ਨੂੰ ਕੌੜੀ ਲੱਗਦੀ ਅੰਦਰ ਨਹੀਂ ਜਾਣ ਦੂ ਕਿਉਂ ਜਾਣ ਦਊਗਾ ਟਾ ਕੇ ਦੋਈ ਦੋ ਨੇ ਕਹਿ ਮਿੱਠੀ ਹੋਊਗੀ ਦਵਾਈ ਨਾ ਦਵਾਈ ਹੈ ਕਿਤੇ ਵੀ ਆਈ ਬਿਟ ਆਹ ਲੈਣੀ ਬੰਦੀ ਸ਼ਬਦ ਦੇ ਸੋ ਚਿੱਤ ਨਾ ਲਾ ਬਈ ਸ਼ਬਦ ਦੇ ਸਿ ਚਿੱਤ ਨਾ ਲਾ ਬਈ ਇਹ ਉਪਦੇਸ਼ ਨਾਲ ਚਿੱਤ ਕਿਉਂ ਨਹੀਂ ਸੁਖ ਹੁੰਦਾ ਹੁੰਦਾ ਹੁੰਦਾ ਸੁਖ ਜੇ ਉਹਦੇ ਨੂੰ ਪ੍ਰੈਕਟੀਕਲ ਕਰੇ ਸੁਖ ਆਜਵੇ ਫਿਰ ਤਾਂ ਚਿੱਤ ਲਾਵੇ ਅਸੀਂ ਕੋਈ ਚੀਜ਼ ਖਾਣੀ ਹੈ ਉਨੇ ਹਾਜਮ ਹੋਣੇ ਟਾਈਮ ਤੱਕ ਉਹਦਾ ਫੇਰ ਉਹਦਾ ਪਤਾ ਲੱਗਣਾ ਸਾਨੂੰ ਲਾਭ ਦਵਾਈ ਦਾ ਜਦੋਂ ਅਸੀਂ ਤੇ ਘਰੇ ਨਾਲ ਤੇ ਤੱਕ ਬਿਲਾਂ ਉਹ ਸੱਤ ਬਰਕਰਾਰ ਦੇ ਕੋਲ ਜੇ ਜੀ ਬਟਨ ਦਬਿਆ ਜਦ ਇਹ ਸਾਨੂੰ ਸੁਖ ਹੋ ਜਾਣ ਕਰ ਚਲੀ ਜਾਣੀ ਉਹ ਤੇ ਸਾਨੂੰ ਭਰੋਸਾ ਇਤਨੀ ਨਹੀਂ ਭਰੋਸਾ ਹੈ ਇਹ ਟੈਬਲ ਉਹ ਦਾ ਹਾਂਏ ਉੱਥੇ ਵੀ ਕੂਲਿੰਗ ਹੁੰਦੀ ਹੁੰਦੀ ਹੁੰਦੀ ਆ ਪਰ ਉੱਥੇ ਭਰੋਸਾ ਹੈ ਭਰੋਸਾ ਇਹ ਸ਼ਾਂਤ ਕੋਈ ਭਰੋਸਾ ਨਹੀਂ ਸਾਨੂੰ ਉੱਥੇ ਕਿਉਂਕਿ ਟਾਈਮ ਲੱਗਦਾ ਤੇ ਕੋਈ ਖਾਂਦਾ ਇਹ ਲੋਕ ਇੰਨੀ ਨਹੀਂ ਟੀਕਾ ਲਾਦੇ ਕੋਈ ਅਤੇ ਛੇਤੀ ਪਤਾ ਲੱਗਦਾ ਹੈ ਉਹਦੇ ਤੇ ਮਨ ਵਿਸ਼ਵਾਸ ਕਰਦਾ ਹੈ ਉਹ ਰੋਦ ਨੂੰ ਯਾਰ ਹੈ ਜਮਨ ਇੰਤਜ਼ਾਰ ਇਹਦੇ ਬਸ ਦੀ ਗੱਲ ਨਹੀਂ ਹੈ ਕਿਤੇ ਜ਼ਾਦੀ ਕੱਲ ਅਣੀ ਕਿੰਨੇ ਜਨਮ ਹੋ ਗਏ ਦਿਨ ਪਰਵਾਹ ਨੂੰ ਫਿਰ ਕਿਹੜੇ ਚੱਕਰ ਚ ਪਈ ਉਹ ਨਹੀਂ ਪਤਾ ਇਹਨੂੰ ਕਾਹਨਾ ਇੰਨਾ ਕਾਲਾ ਰੋਗਾ ਖਿੜਕੀ ਦੇ ਖਣਾ ਪਤਾ ਨਹੀਂ ਮਾਰੀ ਕਾਦਾ ਹੋਊਗੀ ਜੇ ਖਿੜਕੀ ਛੁੱਟ ਗਈ ਨਾ ਏਡ ਲੈ ਤੇ ਬਿਨਾਈ ਬਹੁਤ ਲੰਮੀ ਲਾਇ ਪਿੱਛੇ ਲੈ ਲੈ ਜਿਹੜਾ ਕੁੜਤਾ ਲੈ ਕੇ ਛੱਡੀ ਲੜਕੀ ਖਿੜਕੀ ਦੇ ਖਣਾ ਨੂੰ ਨੰਬਰ ਮਹਾ ਆਇਆ ਪਰ ਪਤਾ ਨਹੀਂ ਮੁਰਕਾ ਜਾਂ ਨੁਕਾ ਵੀ ਬੜੂਆ ਹੈ ਨਹੀਂ ਵੀ ਅਗਲਾ ਜਦੋਂ ਗੁਨਖਾ ਵੀ ਬੜੀ ਜੀ ਮਰਦੀ ਵੀ ਮਰਦਾ ਵਾਰ-ਵਾਰ ਨਹੀਂ ਫੜਦਾ ਹਰ ਵਾਰ ਮੁਰਕਾ ਜਾਂ ਨਹੀਂ ਮਰਦਾ ਕਹਿਣਾ ਮਤਲਬ ਸ਼ਰੀਰ ਦੀਆਂ ਲੋੜਾਂ ਕੋਈ ਹੀ ਜਾਣੇ ਵਾਇਆ ਦੇ ਭੁਗ ਤਾਮਸ ਹੈ ਨਾਮ ਦੀ ਭੁੱਖ ਜਿਹੜੀ ਹੈ ਸੱਚੇ ਨਾਲ ਦੀ ਭੁੱਖ ਹੈ ਆਤਮਾ ਦੀ ਭੁੱਖ ਹੈ ਆਤਮਾ ਦੀ ਖੁਰਾਕ ਹੈ ਸ਼ਰੀਰ ਦੀ ਭੁਰਾਕ ਹੈ ਆਤਮਾ ਦੀ ਲੋੜ ਹੈ ਸ਼ਰੀਰ ਦੀ ਲੋੜ ਹੈ ਜਿੱਤੇ ਤਬ ਤਬ ਭੁੱਖਾਂ ਹੋਤੇ ਹਰ ਕਿਸੇ ਨਾਲ ਉਹ ਵੀ ਪਰੇਸ਼ਾਨ ਹੁੰਦੇ ਵੀ ਲੋੜ ਹੈ ਉਹ ਵੀ ਤਾਂ ਲੋੜ ਹੈ ਯਾਤ ਰਖਾ ਬੋਲ ਤੁਜੇ ਅਕਰਖ ਉਹਦੇ ਲੋੜ ਹੈ ਅਰ ਉਹ ਲੋੜ ਦਾ ਨੂੰ ਪਤਾ ਨਹੀਂ ਦੇਲਵੇ ਜਾਂਦਾ ਉਹਨਾਂ ਨਾਲ ਲੱਗ ਪਾਣੀ ਆ ਕੇ ਦੱਸਿਆ ਨਹੀਂ ਨਾ ਮੇਰੇ ਸੀ ਪੈਸੇ ਵਰਗੇ ਤੇ ਯਾਦ ਕਰਾਇਆ ਇੱਥੇ ਇੱਥੇ ਪੂਰਾ ਇੰਤਜ਼ਾਮ ਕਰਕੇ ਤੁਰਦਾ ਦਿਹਾੜੀ ਵਾਸਤੇ ਤੌਰ ਤੇ ਨਹੀਂ ਹੈ ਉਹਨਾਂ ਨੇ ਕਿਸੇ ਨੂੰ ਦੱਸਿਆ ਵੀ ਸਾਡਾ ਕੀ ਹੋ ਰਿਹਾ اوکے رہے بھائی اوکے بڑی اسو سامنے ہے ਜਿਹੜੀ ਚ ਸਾਹਮਣੇ ਉਹ ਸਾਹਮਣੇ ਹੈ ਦੀ ਉਹ ਹੋਇਆ ਉਹ ਸਾਹਮਣੇ ਤਾਂ ਆਈ ਹੈ ਹਰ ਬਾਰ ਪਰ ਐਸ ਵੇਲੇ ਸਿਮਰਤੀ ਚ ਹੋਈ ਹੋਈ ਹੈ ਬਸ ਉਹ ਸਦਾ ਸਬੰਧ ਕਰਾਇਆ ਜਿਹੜਾ ਗਿਆ ਉਹਨੇ ਦੱਸਿਆ ہاں ਜਿਹੜੇ ਜਿਹੜੇ ਜਾਗੇ ਆ ਉਹਨੂੰ ਸਾਨੂੰ ਕੋਈ ਆਜਾ ਉਹਨੇ ਦੱਸ ਗਿਆ ਜੇ ਜਾਗਦਾ ਉਹਦੋਂ ਲੋਦਾ ਜਿਆ ਦਾ ਗਿਆਨ ਹੋ ਜਾਂਦਾ ਉਹ ਬੇਰਤਾ ਲੋਕ ਜੇ ਕੋ ਬੇਰ ਸਵਾਲ ਕੇ ਕਿਥੇ ਜਰ ਦੇ ਸਵਾਲ ਰਹੇ ਕੀ ਹੁੰਦਾ ਉਹਦੇ ਨਾਲ ਇਹ ਸਵਾਲਾਂ ਦੇ ਜਵਾਬ ਉਹਦੇ ਕੋ ਹੈਗੇ ਨਹੀਂ ਦੱਸਿਆ ਵੀ ਲੋੜ ਪੈਂਦੀ ਹੈ ਇਸ ਗੱਲ ਨੂੰ ਆਮ ਆਦਮੀ ਮੰਨਦੇ ਨਹੀਂ ਵੀਰਾ ਕਿਹਦੇ ਜਾਣੇ ਉਹ ਗੱਲ ਤੇ ਵਿਸ਼ਵਾਸ ਨਹੀਂ ਹੈਗਾ ਸਾਹਮਣੇ ਇੰਨੇ ਸਾਡੇ ਆ ਕੇ ਬੱਤ ਸੁਖ ਮਿਲਦਾ ਕਿ ਮਿਲਦਾ ਕਾ ਨਹੀਂ ਬਲਦਾ ਕੁਝ ਕੁਝ ਐਸੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਪੱਕੇ ਤੇ ਹੁੰਦੇ ਰਹੇ ਨੇ ਜਿਹੜੇ ਕੁਝ ਆ ਕੇ ਦੱਸਦੇ ਉਹਤੇ ਵੀ ਵਿਸ਼ਵਾਸ ਨਹੀਂ ਕਰਦੇ ਆ ਮਗਾ ਰੂਣੀ ਸੇ ਤਾਂ ਗੱਲ ਪੂਰੀ ਖੋਲਲੀ ਵੀ ਜੈ ਬੱਤ ਤੇਰਾ ਕੋਣ ਸਝਾਨੂੰ ਹਾਂ ਪੂਰੀ ਕਿਸੇ ਸਝਾਨੂੰ ਕੋਰੇ ਦਾ ਸਝਾਨੂੰ ਕਿਹਨਾਂ ਉਥੇ ਕਹਿੰਦਾ ਕੋਈ ਜਾਣਕਾਰ ਤੇਰਾ ਤੈਨ ਜਾਣਦਾ ਵੀ ਭਾਈ ਸਾਰੀ ਗੱਲ ਸਾਰੀ ਗੱਲ ਦਾ ਯਾਦ ਕਰਾਈ ਜਾਂਦੀ ਸੰਗ ਸਹੀ ਕੇ ਮਨ ਮੰਦੀ ਗਮਾਂਦ ਸਿਆਸਤੀ ਕਰਦਾ ਸੰਗ ਸਾਰੇ ਸਿੱਧੀ ਗੱਲ ਹੈ ਪੜ ਕੇ ਨੰਗੇ ਉੱਥੇ ਪਰ ਕਿਉਂ ਲਿਖਿਆ ਸੀ ਉਹ ਤਾਂ ਸਵਲ ਸੀ ਉਹ ਜਿਸੇ ਵੱਲ ਆ ਪੂਰੇ 8 ਪਤੇ ਲਿਖੇ ਉਹ ਸਵਲ ਦੇ ਜਿਹੜਾ ਪੁੱលਿਆ ਹੈ ਯਾਦ ਹੋ ਗੱਲ ਕਰਾਈ ਦੀਣੀ ਕੋਲ ਹਰ ਬਾਰ ਇਹ ਹੀ ਤੇਰਾ ਬੀਤੀ ਹੈ ਉਹ ਫੇਰ ਯਾਦ ਨਹੀਂ ਹਰ ਜਨ ਵਿੱਚ ਇਹ ਗੱਲ ਹੁੰਦੀ ਹੈ ਫੇਰ ਯਾਦ ਨਹੀਂ ਇਹ ਕਿ ਸਭ ਨੂੰ ਕੀ ਆਪਣਾ ਸਮਝਣਾ ਆਉਂਦਾ ਹੈ ਸਿਰਵਲ ਨੂੰ ਚਿੱਤੇ ਕਰ ਜਿਹੜੀ ਕੱਟਣਾ ਪਹਿਲਾਂ ਬੀਤੀ ਹੈ ਹੱਡ ਬੀਤੀਆਂ ਨੂੰ ਚਿੱਤੇ ਫਿਰ ਭੁੱਲ ਗਿਆ ਹੱਡ ਬੀਤੀਆਂ ਲਿਖੀ ਆ ਜਿਹੜੀ ਕੋਲੇ ਹਿੰਮ ਢਿੜ ਉਹ ਬੀਤੀਆਂ ਭੁੱਲ ਗਿਆ ਪਿਛਲੀ ਭੁੱਲ ਗਿਆ ਪਿਛਲੀ ਭੁੱਲ ਗਿਆ ਹਾਂ ਯਾਨੀ ਨਾ ਇਹ ਬਿਫਲਾ ਤਾਮਸ ਲੱਗਾ ਸਦਾ ਫਿਰੈ ਐਨਸ ਜਲ ਤੋਂ ਬਿਹਾਏ ਤਾਮਸ ਲੱਗਾ ਸਦਾ ਫਿਰੈ ਐਨਸ ਜਲ ਤੋਂ ਲੱਗਾ ਮਾਸਕਾਂ ਨੇ ਵੈਸੇ ਕਲਮ ਕੰਨ ਕਾਉਨਸਲ ਸਿਆਹੀ ਨੂੰ ਮਾਸਕਾਂ ਨੇ ਤਾਮਸ ਸਦਾ ਫਿਰੈ ਐਨਸ ਲੱਗਿਆ ਰਹਿੰਦਾ ਉ ਗਿਆਨ ਤਜ ਫਿਰ ਤੋ ਰਿਆ ਫਿਰ ਤੋ ਜੋ ਤੇਰੇ ਮੂਰੇ ਹਸੂ ਨੂੰ ਸੱਚ ਕਰਕੇ ਬੱਡੀ ਨਾ ਸੰਸਾਰ ਨੂੰ ਨਾ ਮੰਨ ਲੈ ਤਾ ਸੱਚ ਆਪਣੇ ਆਪ ਦਾ ਤੈਨੂੰ ਪਤਾ ਨਹੀਂ ਜਿਹੜਾ ਸੱਚ तू ਸੰਸਾਰ ਸੱਚ ਤੂੰ ਆਪ ਹੈ ਓਏ ਜੇ ਦਾ ਸੰਸਾਰ ਨਹੀਂ ਅਜਾ ਤੂ ਹੋਇਆ ਸੱਚ ਨੂੰ ਪ੍ਰਾਪਤ ਕਰਨਾ ਆਤਮਾ ਨੂੰ ਜਾਣ ਲੋ ਆਪਣੇ ਬੋਲ ਨੂੰ ਪ੍ਰਾਪਤ ਕਰ ਲੋ ਸੱਚ ਨੂੰ ਜਾਣਨਾ ਆਪਣੇ ਆਪ ਨੂੰ ਜਾਣ ਲੋ ਬਸ ਹੋਰ ਕਿਤੋਂ ਸੱਚ ਨਹੀਂ ਸਭ ਤੋਂ ਨੇੜੇ ਦੇ ਸੱਚ ਨੂੰ ਜਾਣ ਲੋ ਦਰਿਆ ਬਹੁਤ بڑا ਇੱਕ ਸਰੋਵਰ ਹੈ ਹਜ਼ਾਰਾਂ ਕਰੋੜਾਂ ਦੀ ਆਪਾਂ ਪਾਣੀ ਪੀਣਾ ਪਾਲੇ ਘਰਾਂ ਦੇ ਦੂਰ ਜਾ ਕੇ ਪੀਣੋ ਨੇੜੇ ਦੇ ਘਰਾਂ ਦੇ ਤੋਂ ਪੀ ਲਓ ਉੱਪਰ ਘਰ ਬਾਤ ਤਨ ਕਰ ਕੇ ਪੀਣੇ ਸਿਆਣਾ ਜਿਹੜਾ ਗਾਇਮੇ ਵਿਚਾਲੇ ਤੇ ਜਾ ਕੇ ਪੁੱਛਣ ਜਾਂ ਡੁੱਬ ਜਾ ਵਿਚਾਲੇ ਅੰਗ ਪਾਣੀ ਪੀਣਾ ਤੇ ਨੇੜੇ ਤੋਂ ਪੀ ਲੈ ਦੇਖਣਾ ਜੋ ਚੀਜ਼ ਤੈਨੂੰ ਚਾਹੀਦੀ ਹੈ ਆਪਾਂ ਨੇੜੇ ਤੋਂ ਲੈ ਲੈਣਾ ਨਾ ਉਹੀ ਜੀ ਐ ਰੇੜੀ ਦੀ ਦੁਕਾਨ ਤੋਂਨੇ ਦੀ ਮਿਲਲੀ ਉਹੀ ਜੀ ਜੋ ਸੜਕ ਕੱਪ ਕੇ ਮਿਲਲੀ ਫਿਰ ਜਿਹੜਾ ਪਾਲੇ ਪਾਸੇ ਲੱਗਿਆ ਉਹ ਕਿਉਂ ਉਹ ਸੇਣਾ ਮੰਨਿਆ ਜਾਊਗਾ ਤਾਂ ਕਹਿੰਦੇ ਇੱਥੋਂ ਜਨੰਦੇ ਕੋਈ ਗੱਲ ਨਹੀਂ ਤਾਂ ਕਹੇ ਨਹੀਂ ਆ ਤੇ ਆਤਮਾ ਨੂੰ ਜਾਣ ਲੋ ਸੱਚ ਨੂੰ ਜਾਣ ਲੋ ਤੇ ਬਾਹਰ ਸੱਚ ਕਿੱਥੋਂ ਮਿਲੋ ਬਾਹਰ ਤਾਂ ਆਇਆ ਹਾਂ ਸਾਰਿਆਂ ਦੇ ਅੰਦਰ ਜੋਤ ਨੂੰ ਜਾਣ ਲੋ ਸੱਚ ਨੂੰ ਜਾਣ ਲੋ ਯਾਰੋ ਜੋਤਾਂ ਤੂੰ ਪੁੱਛੂ ਜਤਾ ਪੁੱਛੂ ਜਾਈਂ ਇਹ ਤਾਂ ਫਿਰ ਗੱਲ ਦੀ ਏ ਗੱਲ ਤੇਰੇ ਅੰਦਰ ਵਾਲਾ ਸਾਰਾ ਸੱਚੀ ਏ ਅੱਜ ਬੋਲਦੇ ਨਾਲੇ ਕਹਿ ਵੀ ਦੰਤਰ ਵਸੇ ਬਾਹਰ ਵੀ ਉਹੀ ਬਾਹਰ ਵੀ ਉਹੀ ਜਿਹੜਾ ਬੋਲਦਾ ਏ ਬਾਹਰ ਜਿਹੜਾ ਦੇਖਦਾ ਉਹ ਵੀ ਅੰਦਰ ਵਾਲਾ ਬਾਹਰ ਵਾਲਾ ਇੱਕੋ ਹੀ ਦੋ ਨਹੀਂ ਹੁਣ ਇੱਥੇ ਬਦਲ ਵੇਖੇ ਆ ਬਾਹਰ ਕਹਦੇ ਮਾਇਆ ਵੀ ਉਹੀ ਏ ਅਰਥ ਇਹ ਕਰਦੇ ਨੇ ਆ ਬਾਹਰ ਬਾਇਆ ਵੀ ਹੋਈ ਐ ਅੰਦਰਲਾ ਵੀ ਹੋਈ ਐ ਜਾਨਾ ਜਿੱਦਣੇ ਘਰ ਤੇ ਬਿਦੌਲ ਨੇ ਨੇ ਤੇ ਜੋ ਕੁਦੀ ਦਾ ਇਹ ਵੀ ਹੋਈ ਐ ਉਹਦੇ ਵੀ ਅਰਥ ਇਹ ਕਿਤੇ ਜੋ ਪਰਮੰਡੇ ਸੋਈ ਪੜੇ ਬਾਹਰ ਵੀ ਅੰਦਰ ਉਹਦੇ ਅਰਥ ਗਲਤ ਕਰਦੇ ਆ ਗੱਲ ਚਤਮੰਦੀ ਰਹੀ ਐ ਹਾਂ ਪਈ ਜੋਂਦਰ ਹੈ ਜੋ ਤਾਰ ਚ ਜਾ ਬਿਜਲੀ ਲਾਈਟ ਦਾ ਰੂਪ ਧਾਣ ਕਰਦੀ ਸਾਨੂੰ ਬਾਹਰ ਦਿਂਦੀ ਹੈ ਤਾਰ ਵਾਲੀ ਦਿਂਦੀ ਚੇਤਨ ਇਮਾਨਦਾਰ ਹੁਣ ਧਾਣ ਕੀਤਾ ਚਿੱਤਾਂ ਨਹੀਂ ਦੇਣੀ ਬਾਹਰ ਜੋਤ ਨਾ ਉਹ ਤਾਰ ਵਾਲੀ ਦਾ ਦਿਂਦੀ ਸਾਨੂੰ ਪਰ ਉਹੀ ਆ ਜਿਹੜੀ ਦਿਨ ਹੈ ਮੈਰ ਬਣੀ ਲੈਡ ਰੋਸ਼ਨੀ ਚ ਰਹੀ ਦੇ ਰੂਪ ਤਬਦੀਲ ਹੋਈ ਹੈ ਉਹ ਨਲੀ ਹੋਈ ਉਸੇ ਸ਼ਕਤੀ ਦਾ ਰੂਪ ਉਹ ਕੁਝ ਕਰਦੀ ਦਿਖ ਰਹੀ ਹੈ ਅੰਦਰ ਵਾਲਾ ਕੁਝ ਕਰਦਾ ਨਹੀਂ ਦਿਖ ਰਿਹਾ ਸਾਡੇ ਸਰੀਰ 'ਚ ਅਸੀਂ ਕਹਿੰਦੇ ਜੋਰ ਤਾਕਤ ਸ਼ਕਤੀ ਕਹਿੰਦੇ ਹੂੰ ਅਪਲਾਈ ਕਰਦੇ ਹਾਂ ਉਹ ਉਹ ਪ੍ਰਗਟ ਰੂਪ ਨੂੰ ਲੱਗੂਂਗਾ ਕਿ ਲੰਗ ਗੀਆ ਚੱਕ ਕੇ ਦਿਖਾ ਜਾਂ ਚੱਕ ਲੈਂਦਾ ਜਾਂ ਨਹੀਂ ਚੱਕਦਾ ਪਤਾ ਲੱਗਦਾ ਨਾ ਜੋਰ ਦਾ ਪਰ ਫਿਰ ਉਹ ਵੀ ਜੋਰ ਹੈਗਾ ਕਿ ਨਹੀਂ ਦੇਖ ਲੈਣਾ ਕਿੰਨਾ ਜੋਰ ਹੈ ਤੇਰੇ ਚ ਹੂੰ ਹੁੰਦਾ ਕਿੰਨੀ ਤਾਕਤ ਕੀ ਕਰਾਂਗਾ ਹੂੰ ਤਾਰ ਜਬਿਲੀ ਕਿੰਨੀ ਪੱਖਾ ਚੱਲਦਾ ਹੌਲੀ ਹੋ ਨਹੀਂ ਹੋ ਤਾਂ ਹੀ ਪਤਾ ਲਾਈਟ ਡੇਮ ਤਾਂ ਹੀ ਪਤਾ ਲੱਗੂ ਫਿਰ ਪਤਾ ਲੱਗੂ ਇਹ ਟਿਊਬਲਾਈਡ ਦਾਪਤਨ ਗੁਪਤ ਹੈ ਅੰਮਗਲ ਦਾਪਤਨ ਗੁਪਤ ਬਾਹਰ ਉਹ ਦਾ ਪ੍ਰਗਟ ਰੂਪ ਹੈ ਬਾਹਰ ਵਾਲਾ ਪ੍ਰਗਟ ਰੂਪ ਹੈ ਹਮ ਹਮ ਅੰਦਰ ਵਾਲਾ ਗੁਪਤ ਰੂਪ ਹੈ ਇਸ ਕਾ ਕਿ ਦੇਹੀ ਜਿਹੜੀ ਗੁਪਤ ਹੈ ਇਹਨੂੰ ਦਿੱਸੇ ਤੋਂ ਪੈਦਾ ਮੰਨਦਾ ਹਮ ਏਬ ਦੇ ਹੀ ਹੈ ਇਹ ਇਹਦਾ ਰੂਪ ਇਹਦੇ ਬੰਦਗੇ ਰੂਪ ਇਹਦਾ ਇਹ ਵੀ ਦੇ ਹੀ ਹੈ ਇਹਦੀ ਵੀ ਹੈ ਮਦੇ ਹੀ ਰੂਪ ਤਾਂ ਮੁਸਰਾਕਾਰ ਲੈਵਲ ਗੱਲ ਕਰੀਏ ਦੇਹੀ ਗੋਦ ਬਤੇ ਦੀ ਸਰ ਰੇਥੇ ਹੱਥ ਕਰਦੇ ਤੂੰ ਇਸ ਕਰਕੇ ਮਰਨਾ ਹੀ ਪੈਣਾ ਜੋ 500 ਜੋ ਸਰ ਮਰੂ ਜਦੋਂ ਆਪ ਰਾਮ ਗਰਭ ਹੋਏ ਆਏ ਉਭਜੇ ਨਾ ਹੂੰ ਇਹਨਿੰ ਬਿੰਦਸ ਜੋ ਉਭਜੋ ਸੋ ਦਸ ਬਿੰਸੇ ਗੁਰੂ ਕਾਲ ਮਨ ਲੈ ਬਿੰਦਸ ਮੇਰਾ ਕਾ ਲੈਵਲ ਤੇ ਸੱਚ ਹੈ ਇਹ ਨਹੀਂ ਹੈਗਾ ਵੀ ਉਹ ਮਨ ਵੀ ਉਭਜੇ ਇਹਨੇ ਬਿੰਸਣਾ ਹੀ ਰੁਕ ਜਾ ਉਹ ਬਾਹਰ ਹੋਇਆ ਨਾ ਉਹ ਫਿੱਟ ਅਲੱਗ ਹੋਇਆ ਨਾ ਓਏ ਉਹ ਉਹ ਦੋ ਉਹ ਵਿਛ ਗਈ ਤਾਂ ਹੋਇ ਨੀ ਹੂੰ ਉਹ ਵਿਛ ਗਈ ਵੱਖਰਾ ਹੋਇਆ ਨਾ ਜਦੋਂ ਉਹ ਪੀੜ ਪੇੜ ਜਾੜਾ ਡੋਹ ਜਾਂਦੀ ਹੈ ਉਤਨਾ ਹੀ ਸਾੜ ਡੋਹ ਜਾਂਦਾ ਇਸੇ ਦੋ ਫਲ ਵਰਦਾ ਕੋਪਤਾ ਧਾਤੀ ਤਾਂ ਕਿ ਪੇੜ ਲੱਗੇ ਫਲ ਇਛਾਵਾਂ ਲੱਗਦੀਆਂ ਰਹਿੰਦੀਆਂ ਇਛਾਵਾਂ ਪੂਰੀਆਂ ਵੀ ਹੁੰਦੀਆਂ ਨੇ ਫਲ ਵੀ ਪ੍ਰਾਪਤ ਕਰਦਾ ਹੈ ਜਨਮ ਦੀ ਪਿੱਛਾ ਭੁੱਖ ਪੈਦਾ ਹੁੰਦੀ ਹੈ ਫੁੱਲ ਵੀ ਆਉਂਦਾ ਕਰਮ ਕਾਂਡ ਦੇ ਨਾਲ ਫੁੱਲ ਤੱਕ ਵੀ ਪਹੁੰਚ ਜਾਂਦਾ ਚੰਗੇ ਕਰਮਾਂ ਨਾਲ ਫਲ ਵੀ ਦਾ ਫਲ ਵੀ ਲੱਗਦਾ ਗਿਆਨ ਫਲ ਵੀ ਲੱਗਦਾ ਸਮਝਣ ਲੱਗੀ ਜਾਦਾ ਹੋ ਜੀ ਗਿਆ ਇਹ ਪੇੜ ਜਦ ਬਣਦਾ ਨਾ ਨਾਨਕ ਗੁਰਸਤ ਤੋਂ ਰੁਖ ਧਰਮਪੂਰਨ ਫਲ ਗਿਆਨ ਇਹਨੂੰ ਫਲ ਲੱਗਦਾ ਵੀ ਪਰ ਨਿਸਫੜਕਾ ਚੱਲੇ ਜਾਂਦਾ ਨਿਸਫੜਕਾ ਚੱਲੇ ਜਾਂਦਾ ਪੈਦਾ ਤਾਂ ਹੋ ਗਿਆ ਬਣ ਛੁਟੇ ਤੇ ਲੋ ਬੋੜ ਜੂ ਸੁਝੇ ਅੰਦਰ ਕੇ ਇਹ ਕਲਪਨਾ ਕਰਦਾ ਮਾਇਆ ਦੀ ਭੁੱਖ ਕਰਦਾ ਫਿਰ ਉਹ ਫੜੀਏ ਫੁੱਲੀਏ ਬੱਪੜੇ ਪੀਦਾਂ ਦੇ ਵੀ ਬਹੁਤ ਵੱਡਾ ਹੋ ਜਾਂਦਾ ਵੱਡੀਆਂ ਵੱਡੀਆਂ ਬਿਲਡਿੰਗਾਂ ਘੜੀਆਂ ਕਰ ਵੀ ਘੜੀਆਂ ਕਰ ਲੈ ਲੈਂਦਾ ਸਾਰੇ ਉਹ ਵੀ ਪਰ ਵਿੱਚ ਸੋਹੇ ਰਹਿੰਦੇ ਬੱਚੇ ਵੀ ਬ੍ਰਤਤਰੀ ਨੂੰ ਪੀਤਰ ਪੜੀ ਪੰਗਾਰ ਸੱਤ ਦਿਨ ਉਹ ਇੱਥੇ ਹੀ ਰਹਿ ਜਾਣੇ ਇੱਥੇ ਰੋਏ ਹੋਣ ਸੱਤ ਦਿਨ ਖੈ ਫਾਮਸ ਲੱਗਾ ਸਦਾ ਫਿਰੇ ਜੋ ਵੀ ਉਪਦੇਸ਼ ਕਰਦਾ ਹੈ ਜੋ ਵੀ ਦੁਨੀਆ ਆਪਣੇ ਤਿਆਰ ਬੇਰੀ ਗੱਲ ਦੱਸਦਾ ਕਿਤਾਬਾਂ ਲਿਖਦਾ ਹੈ ਹੂੰ ਤਾਂ ਤ ਦੀ ਗੱਲ ਮੈਂ ਕਿਵੇਂ ਵੀ ਰਹਾ ਤੁਸੀਂ ਵੀਰ ਕਿਵੇਂ ਹੋਗੇ ਬਤਾ ਗੱਲ ਦੱਸੋ ਆਰੋੜ ਕੇ ਮੈਨੂੰ ਬਤਾਈਦਾ ਇਹ ਗੱਲ ਦੱਸੂਗਾ ਨਾ ਉਹ ਉਹ ਆਪਣਾ ਗੱਲ ਦੱਸੂਗਾ ਤਾਰੀ ਤਾਂ ਨਾਲੇ ਗੱਲ ਦੱਸੂ ਹਾਂ ਗੱਲ ਕਰੂ ਕਿੰਨੇ ਬਣ ਜਾ ਕਾਂਸੀ ਦਾਬਾ ਫਿਰ ਇਹ ਕਿ ਤੇ ਕੋਰ ਔਰ ਟਾਂਡਾ ਉਹਦਾ ਵੀ ਲੱਦਿਆ ਜਾ ਰਿਹਾ ਹੈ ਨਾ ਪਤਾ ਪਿਆ ਦੋੜ ਦਾ ਉਹ ਗਿਆਨ ਕੋਣ ਦਾ ਉਹਨੇ ਵੀ ਭਲੀ ਹੋਈ ਠੀਕ ਹੋ ਗਿਆ ਉਹ ਚੱਕਰ ਚ ਪੈ ਗਿਆ ਸੀਗਾ ਪੈ ਗਿਆ ਸੀਰਾ ਵਪਾਰ ਦਾ ਫਾਕ ਫਤਾਲਾ ਕਿੰਦਾ ਚੱਕਰ ਚ ਬੈਠਦਾ ਨਹੀਂ ਸਮਝਦੀ ਆਉਂਦੀ ਫਿਰ ਪੇੜ ਨੂੰ ਸੁਣਦਾ ਵੀ ਹੁੰਦਾ ਹੈ ਪੇੜ ਨੂੰ ਦੀਨਾ ਵੀ ਹੁੰਦਾ ਹੈ ਪੇੜ ਨੂੰ ਸੁਣਦਾ ਕਿ ਬੀਜ ਨੂੰ ਨਾ ਸੁਣਦਾ ਨਾ ਦੀਨਾ ਹੈ ਇਹ ਬੀਜ ਰੂਪ ਚ ਪਰ ਹੋੜੇ ਇਹਨੂੰ ਮਾਇਆ ਹੀ ਦੀਦੀ ਹੈ ਦੇਖੋ ਇਹ ਹੋਇਆ ਹੈ ਸਾਨੂੰ ਦੀਦੀਆ ਮਾਇਆ ਜਿਹੜਾ ਘਰ ਦੀ ਹੈ ਨਹੀਂ ਉਹ ਖਾਂਦੀ ਨਾ ਦੀਨਾ ਹੈ ਸੁਣਦੀਆ ਮਾਇਆ ਹਵਾ ਚੰਦ ਮਾਇਆ ਦੇ ਸਾਧਨਾਂ ਨੂੰ ਸੁਣਦਾ ਮਾਇਆ ਦੇ ਸਾਧਨ ਸਾਡੇ ਕੋਲ ਖੰਡ ਨਹੀਂ ਵੀ ਮਾਇਆ ਕੀ ਇਹਦੇ ਨਾਲ ਹੈ ਤਾਂ ਮਾਇਆ ਦਾ ਹੀ ਹੈ ਪਰ ਇਹਦੇ ਨਾਲ ਅਸੀਂ ਸੱਚ ਬਾਰੇ ਸਮਝਣੇ ਕੁਝ ਆਪਣੇ ਬਾਰੇ ਸਮਝਣੇ ਆਤਮ ਬਾਰੇ ਸਭ ਬਾਰੇ ਬਹੁਤ ਸਮਝਣ ਦੀ ਲੋੜ ਨਹੀਂ ਜਿੰਨਾਂ ਨੂੰ ਲੋੜ ਹੈ ਮਾੜਾ ਮੋਟਾ ਉਹਨਾਂ ਨੂੰ ਸਮਝ ਲੋ ਇਹੋ ਜੈਸ ਕੋਸ਼ ਕਰਦੇ ਇਧਰੋਂ ਪੈਗੇ ਤਾਂ ਆਹ ਰਹਿ ਜੂਗਾ ਇਹ ਨਾ ਨਾ ਇਹ ਹਾਲੇ ਸਾਡੇ ਕੋ ਸਾਧਨ ਹੈ ਪਰ ਸਮਝਣਾ ਸੀ ਹਾਤੋਂ ਯਾਰ ਦੇ ਇਹਦੇ ਉਹਦੇ ਬਾਅਦ ਕੀ ਹੋਣਾ ਹੈ ਉਹਦੇ ਬਾਅਦ ਇਹ ਜਨਮ ਖਤਮ ਹੋ ਜਾਣਾ ਮਾਇਆ ਨੂੰ ਸਮਝਣਾ ਮਾਇਆ ਨੂੰ ਸਮਝਣ ਵਾਲਾ ਕੰਮ ਖਤਮ ਹੋ ਕੇ ਜਨਮ ਇਹਦਾ ਖਤਮ ਹੋ ਜਾਣਾ ਅਸਲ ਵਿੱਚ ਜਨਮ ਖਤਮ ਹੋ ਰਿਹਾ ਹੈ ਜਾਨ ਨਹੀਂ ਜਾ ਰਹੇ ਅੰਦਰ ਮਰ ਜਾਣਾ संसारी जन्म ਖਤਮ हो ਜਾਵੇ ਉਦਲੇ ਸੰਸਾਰੀ ਜਨਮ ਖਤਮ ਹੋ ना ਤੋਂ ਨਾ ਕੋ ਲੈਣਾ ਨਾ ਸੰਦਾ ਨਾ ਕੋ ਮਤਲਬ ਹੈ ਲੈਣਾ ਨਹੀਂ ਦੇਣਾ ਤਾਂ ਜੋਤਾ ਹੈਗਾ ਦੇਣ ਵਾਲੀ ਗੱਲ ਤਾਂ ਬਾਤ ਹੀ ਹੈ ਨਾ ਮਨ ਮਰ ਗਿਆ ਇੱਕ ਹੋ ਗਿਆ ਬੀਜ ਫਿਰ ਬਣ ਗਿਆ ਫਿਰ ਬੀਜ ਬਣ ਗਿਆ ਦੇਖੋ ਤੁਰੇ ਨੂੰ ਉਧਰ ਨਹੀਂ ਗਿਆ ਰਹੇਗਾ ਸੱਚ ਕਰਨਾ ਮੇਰਾ ਕਰਨਾ ਹੋਤਾ ਜਿਹੜਾ ਸੰਸਾਰ ਜਿਹੜਾ ਆ ਦੱਸਿਆ ਇਹ ਉਹਨਾਂ ਨੇ ਕਿਹਾ ਜੋ ਬੰਗੇ ਠਾ ਕੋ ਆਪਣੇ ਤੇ ਸੋਈ ਸੋਈ ਦੇਵੇ ਹਰ ਸਵਾਲ ਦਾ में ਇਹਨੇ ਕੋਰ ਦਿੱਇਆ ਸੰਸਾਰ ਕਿਵੇਂ ਬੜੇ ਸੱਚੇ ਤੇ ਬਬਲਾ ਤੇ ਆਪ ਆਪਣਾ ਤੇ ਇਹ ਸਵਾਲ ਪੁੱਛਿਆ ਉਹਨੇ ਧਾਕਰ ਤੋਂ ਪੁੱਛਿਆ ਵੀ ਇਹ ਜਵਾਬ ਇਹਦਾ ਕੀ ਹੈ ਤੁਹਾਨੂੰ ਦੱਸਦਾ ਜਿਹਨੇ ਸੰਸਾਰ ਬਣਾਇਆ ਉਸਨੇ ਦੱਸਿਆ ਹੈ ਕਿਆ ਬਣਾਇਆ ਹੈ ਬਈ ਬਣਾਇਆ ਦਸਤਾਰ ਇਹ ਸੋਜੀ ਬੀਜ ਨੂੰ ਨਹੀਂ ਹੂੰ ਵਰਸ਼ਾ ਤੇ ਹੁੰਦੀ ਪੁੰਰਾਗਾਰੀ ਵਰਸ਼ਾ ਤੁਹਾਨੂੰ ਜਿਹੜਾ ਸ਼ਬਦ ਪੈਦਾ ਹੋਣਾ ਅੰਦਰੋਂ ਇਹ ਅੰਦਰੋਂ ਐਨਾ ਸਾਡਾ ਜੋ ਬੋਲਦੇ ਨੇ भी ਸ਼ਬਦ ਹੈ ਨਾ ਕਲਪਨਾ ਵੀ ਇੱਕ ਸ਼ਬਦ ਹੈ ਉਹ ਅੰਦਰੋਂ ਜਿਹੜਾ ਫੋਟਾ ਉਹ ਜਰੂਰ ਤੋਂ ਬਲਰਾਜ ਅਰੰਭ ਕੀ ਕਹਾਣੀ ਜਦੋਂ ਫਿਰ ਕਿਤੇ ਜਾਂਦਾ ਤੇ ਆਣਾ ਜਾਂਦਾ ਜਿੱਥੇ ਜਾਂਦਾ ਤੇ ਆਰ ਨਹੀਂ ਜੁੜਦਾ ਜਿੱਥੇ ਜਾਂਦਾ ਘਰ ਦੇ ਵਿੱਚ ਹੀ ਚੱਕ ਲੈਣੀ ਹੈ ਕੀ ਜਿੰਬੀ ਜਿੱਥੇ ਪਈ ਹੈ ਅੰਦਰੇ ਪਈ ਹੈ ਸਭ ਕੁਝ ਸਭ ਕੁਝ ਘਰ ਵਿੱਚ बाहर, ता ਬਾਰ ਦਾ ਤਾਂ ਜਾਵੇ ਜੇ ਬਾਰ ਕੁਝ ਹੋਵੇ ਜੋ ਚਾਹੀਦਾ ਉਹ ਤਾਂ ਘਰ ਚ ਹੈ ਜਾਣ ਤਾਂ ਨਹੀਂ ਪੈਦਾ ਕਿ ਸਭ ਕੁਝ ਜਿੱਥੇ ਬੈਠੇ ਬੈਠਾ ਉੱਥੇ ਹੀ ਹੈ ਦੇਖੋ ਜਿਹਨ ਜੋ ਚਾਹੀਦਾ ਘਰੋਂ ਮਿਲ ਜਾ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰੋਂ ਜਵਾਬ ਨਹੀਂ ਇਹ ਚੀਜ਼ ਦਾ ਮਿਲਦਾ ਸੱਚੇ ਤੇ ਬੋਲੋ ਬਾਹਰੋਂ ਤਾਂ ਉਸ ਲੱਗਾ ਸਦਾ ਫਿਰੈ ਐਨੇ ਸੇ ਜਲਤ ਬਿਹਾਏ ਤਾਂ ਉਸ ਲੱਗਾ ਸਦਾ ਫਿਰੈ ਤਾਂ ਉਸ ਤੇ ਵੀ ਲੱਗਾ ਫਿਰੈ ਐਨੇ ਸੇ ਜਲਤ ਬਿਹਾਏ ਐਨੇ ਤੇ ਜਲਤ ਮਾਇਆ ਦੀ ਕੋਖ ਹੈ ਮਾਇਆ ਅਗਰ ਉਸ ਬਿੱਖੋ ਜੀ ਕਰਤੇ ਕੇਲ ਤੇ ਅਗ ਖਾਊਗਾ ਤੇ ਅਗ ਦਾ ਸੇਖ ਨਹੀਂ ਆਊਗਾ ਕਿ ਮਰ ਸਕਦਾ ਜਲਰ ਨਹੀਂ ਹੋਊਗੀ ਜਲਤ ਬਿਹਾਏ ਐਨੇ ਜਲਤ ਬਿਹਾਏ ਦੇ ਰਾਤ ਜਲ ਜਲਦਾ ਰਹਿੰਦਾ ਐਵੇਂ है, ਜਾਂਦੀ ਐ ਜੇ ਅੱਗ ਖਾਊਗਾ ਤਾਂ ਜਲ ਜਲ ਉਤਦੀ ਘੁੱਡੀ ਆਪੇ ਜੇ ਰਹੂਗਾ ਤੇ ਜਲਨ ਤਾਂ ਉਦੀ ਘੁੱਡੀ ਸੇਕਦਾ ਉਹਦਾ ਲੱਗੜੇ ਲੱਗਣੇ ਤਾਂ ਉਸਰੇ ਵਿੱਚ ਜਲ ਰਹਿਣੀ ਐ ਕੋਈ ਨਾ ਕੋਈ ਚਿੰਤਾ ਰਹਿਣੀ ਐ ਕਿਸੇ ਨਾ ਕਿਸੇ ਨਾਲ ਗੁੱਸਾ ਗਿੱਲਾ ਵੀ ਰਹਿਣਾ ਐ ਅੰਨੇ ਨੇ ਕੀਤਾ ਕਿਤਾਬ ਲੈਨੇ ਹੋਰੀ ਕਿਤਾਵ ਤੇ ਤਿਆਰੀ ਵੇਲੇ ਆ ਟਾਈਮ ਤੇ ਜੋ ਇਰ ਕੋਈ ਸ਼ਿਕਾਇਤ ਕਿਸੇ ਨੂੰ ਕਿੰਦਾ ਹਰ ਵਕਤ ਹੈ ਜਾਏ ਜੋ ਸੋਥੀ ਹੈ ਕਹਿਣਾ ਕਿਛੂ ਨਾ ਜਾਏ ਅਸਲ ਵਿੱਚ ਜਿਹੜਾ ਇੱਕ ਇਹਨੂੰ ਕੀ ਬੋਲਦਾ ਪੋਈ ਉਹ ਜਾਣਾ ਜੇ ਤਾਂ ਜਲਦ ਪਿਆਇਆ ਤਾਂ ਮਸ ਲੱਗਾ ਫਿਰਦਾ ਤੇ ਜਲਦ ਪਿਆਇਆ ਪਰ ਇਹਨੂੰ ਇੱਕ ਚਾਹੁੰਦਾ ਹੀ ਇਹ ਕਰੇ ਕਿ ਜੇ ਨੂੰ ਥੋੜੀ ਕੀ ਤੈ ਆਪੇ ਪਰਮੇਸ਼ਰ ਵਾਸਤੇ ਨਹੀਂ ਆਇਆ ਆ ਇਹਦੇ ਵਾਸਤੇ ਆਪੇ ਤੂੰ ਆਪੇ ਭਾਈ ਚਾਹੁੰਦੇ ਜਲਣਾ ਅੱਛੀ ਕਵੀਦਾਰ ਦੇ ਵਿੱਚ ਤਾਂ ਜੜੂ ਗਰਜੀ ਕਤ ਬਣੀ ਹੈ ਜੀ ਦੁਆ ਇਹਦੇ ਚ ਦੱਸੋ ਕੀ ਕਰੇ ਕਹਿਣਾ ਕਿਸ ਨੂੰ ਜਾ ਦੁਜਾ ਕੀ ਕਰੇ ਕਿਉਂ ਜਾਉਣਾ ਤੂੰ ਇਹਦੇ ਬਾਰੇ ਕੋਈ ਨਹੀਂ ਕੁਝ ਕਹਿ ਸਕਦਾ ਇਹ ਜਾਣਦਾ ਹੋਇਆ ਵੀ ਦੱਸਿਆ ਹੋਇਆ ਵੀ ਫੇਰ ਵੀ ਨਹੀਂ ਹਟਦਾ ਕਿਉਂ ਨਹੀਂ ਹਟਦਾ ਇਹਦੇ ਬਾਰੇ ਦੁਆ ਕੁਝ ਨਹੀਂ ਕਰਦਾ ਤੈਨੂੰ ਇਹ ਬਤਾਉਂ ਤੂੰ ਕਿਉਂ ਨਹੀਂ ਹਟਦਾ ਫਰਜ਼ ਲੱਗੀ ਗਰਦੀ ਦੀ ਪਰਮੇਸ਼ਰ ਤੇਰੀ ਇਹ ਗੱਲ ਹੈ ਜੇ ਪਰਮੇਸ਼ਰ ਤੇ ਲਾਤੀ ਸਾਰਾ ਬੇੜ ਘਰ ਖੋ ਜੂਗਾ ਚੀਕਾ ਵੀ ਬਾਰਦਾ ਗਰਮ ਲੱਗਦਾ ਬੀ ਛੱਡ ਦੇ ਛੜਦਾ ਬਲੀ ਕੋਈ ਸਮਝ ਨਹੀਂ ਨਹੀਂ ਅਗੇ ਨੂੰ ਨਾ ਹੋ ਜਾਏ ਨਾ ਬਸ ਤਾੜਾ ਕਹੀ ਹੋ ਜਾਏ अपने ਆਪਣੇ ਮਨ ਤੇ ਹੀ ਇਹ ਗੱਲ ਅਸੀਂ ਕਹਿ ਰਹੇ ਫਿਰ ਕਹਣਾ ਕਸ਼ੁਲ ਜਾਈ ਆਪੇ ਹੀ ਸਾਡੀ ਵਿਸਥਾ ਹੋ ਜਾਂਦੀ ਇਹ ਗੱਲ ਕੀ ਹੈ ਮਨ ਮੰਦਾ ਬਲੀ ਕੀ ਕਾ ਵੀ ਮਾਰਦਾ ਹੈ 14 ਵੀ ਹੈ ਵੀ ਫਿਰ ਇਹ ਵਿਸਥਾ ਹੋ ਜੀਵੇ ਹੁਣ ਦੱਸੋ ਦੱਸੋ ਇਹਦੇ ਬਾਰੇ ਇਹਦੀ ਵਿਆਖਿਆ ਕਰੋ ਜੇ ਤੁਸੀਂ ਇਹਦੇ ਬਾਰੇ ਕੁਝ ਕੀ ਕਰਨਾ ਚਾਹੀਦਾ ਤਾਂ ਬਾਅਦ ਚੀ ਕਰਦਾ ਹੈ ਚ ਹੈ ਬਸ ਭਗਤੀ ਦਾ ਆਪਣੀ ਜੇ ਕਹਣਾ ਤਾਂ ਸੁਣਾ ਜਾਇ ਪਰਮੇਸ਼ਰ ਵੱਲ ਆਤੀ ਦੋ ਜੋਤਿਸ ਭਾਗਾ ਸੋਥੀ ਹੈ ਅਸਲ ਇਹ ਜੋ ਹੈ ਜੀਵ ਚਾਹੁੰਦਾ ਉਹੀ ਹੁੰਦਾ ਹੈ ਹਾਂ ਨਾ ਹੀ ਕਹੇ ਹਾਂ ਜੀ ਉਰਸ ਤੋਂ ਗੱਲ ਜੇ ਇਹ ਭੁੱਖੇ ਨੂੰ ਆਇਆ ਜੀ ਤਾਂ ਫਿਰਦਾ ਤੇ ਜਿਹੜਾ ਜੰਗ ਦਾ ਤਾਂ ਸੁਣ ਲਿਆ ਹਾਂ ਤੇ ਜਨਨ ਤਾਂ ਹੋਊਗੀ ਉਹਦੀ ਜਨਨ ਹੁੰਦੀ ਐ ਫਿਰ ਕਿਉਂ ਨਹੀਂ ਛੱਡਦੇ ਤੇ ਆਪਣਾ ਪੜਾ ਤੇ ਕੀ ਮਜਬੂਰੀ ਐ ਹੁਣ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਤੇ ਆਪਣਾ ਆਪਣਾ ਪੜਾ ਕੀ ਕਾਰਨ ਗੱਲ ਆ ਛੱਡਦਾ ਤੇ ਕਾਹਨੂੰ ਹੀ ਨਹੀਂ ਛੱਡਦਾ ਸ਼ਰਾਬ ਨਹੀਂ ਛੱਡਦਾ ਚਲੋ ਰੋਜ਼ ਅਣਦਾਵਿਆ ਕਲੇਸ਼ ਵੀ ਕਰਦਾ ਤੇ ਘਰ ਵੀ ਕਲੇਸ਼ ਕਰਦਾ ਕਿਉਂ ਨਹੀਂ ਛੱਡਦਾ ਸਭ ਕੁਝ ਜਾਣਦਾ ਹੋਇਆ ਵੀ ਇਹ ਤੋਂ ਨੂੰ ਕੋਈ ਦੱਸ ਇਹ ਤੋਂ ਨੂੰ ਪੁੱਛੋ ਕਿਉਂ ਨਹੀਂ ਛੱਡਦਾ ਇਹ ਤੋਂ ਉਹ ਹੀ ਜਾਣੇ ਕਿਉਂ ਨਹੀਂ ਛੱਡਦਾ ਹਾਂ ਸਮਝਿਆ ਨਹੀਂ ਸਾਰੇ ਸਮਝਾ ਕੇ ਥੱਕ ਲੈਂਦੇ ਨੇ ਉਹ ਨਹੀਂ ਛੱਡਦਾ ਪਰਮੇਸ਼ਰ ਦਾ ਕੋਈ ਰੋਲ ਨਹੀਂ ਗਲਤ ਲੱਗਦਾ ਆਪਣੇ ਭਾਣੇ ਚੱਲਦੇ ਭਾਈ ਆਪਣੇ ਜੋ ਚਾਹਦਾ ਹੋਵੇ ਚੱਲਦਾ ਜੋ ਨੂੰ ਚਾਹਦਾ ਹੋਵੇ ਚੱਲਦਾ ਆਪਣੇ ਜੇ ਚੱਲੇ ਭਾਈ ਬੋਲ ਬੈਠਾ ਦੋਈ ਗੱਲਾਂ ਕਹਿੰਦੀ ਆ ਆਫਰ ਆਪਣੇ ਪਾਣੇ ਲੋਕ ਕਿਉਂ ਚੱਲਦੇ ਨੇ ਇਹਦੇ ਬਾਰੇ ਕੋਈ ਉਹ ਆ ਕੋਈ ਨਹੀਂ ਕਹ ਸਕਦਾ ਪਰਮੇਸ਼ਰ ਨੇ ਜੇ ਚਲਾਇਆ ਕਹਿ ਲੀਓ ਫੇ ਕਸੂਰ ਵਾਰ ਪਰਮੇਸ਼ਰ ਅਗਰ ਤੁਸੀਂ ਬੜੀ ਤੇ ਬੜੀ ਹੱਬੇ ਜਿਵੇਂ ਨੂੰ ਬਹਾਉਂ ਮੇ ਹੋਈ ਜਾਂਦਾ ਸੀ ਪਤਾ ਹੈ ਕਿ ਮੁੰਡਾ ਪਰਮੇਸ਼ਰ ਹੈ ਉਹਨੇ ਤਾਂ ਭੋਲੇ ਸਕੂਲ ਸਾਰਿਆਂ ਨੂੰ ਸਿੱਧੇ ਚਲਾਉਣ ਵਾਸਤੇ ਚੱਲਣ ਵਾਸਤੇ ਜਗਾ ਜਗਾ ਆ ਕੇ ਬੰਦੇ ਭੇਜੇ ਨੇ ਉਹਨਾਂ ਨੂੰ ਫਰੇਸ ਭੇਜਿਆ ਵੀ ਪਾਈ ਐ ਨਾ ਕਰੋ ਐ ਕਰੋ ਪਰ ਉਹ ਕਹਿੰਦੇ ਹੁਣ ਸਾਨੂੰ ਵੀ ਨਹੀਂ ਪਤਾ ਬੰਦੇ ਵੀ ਭੇਜਦੇ ਸਭ ਕੁਝ ਕਰਦਾ ਫੇਰ ਉਹ ਨਹੀਂ ਹਟਦਾ ਕਿਉਂ ਨਹੀਂ ਹਟਦਾ ਇਹਦੇ ਬਾਰੇ ਕਹਿੰਦੇ ਅਸੀਂ ਵਾਲੇ ਸਾਡੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਕਿਉਂ ਕਰਦਾ ਸਕੂਲ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਵੀ ਤੁਹਾਡਾ ਬੰਦਾ ਕਿਉਂ ਨਹੀਂ ਪੜਦਾ ਕਹਿੰਦੇ ਅਸੀਂ ਤਾਂ ਬਸੇਰੀ ਬਾਜ਼ ਆਲੀ ਪਰ ਸਾਡੀ ਸਮਝ ਤੋਂ ਪਰੇ ਹੀ ਕਿਉਂ ਨਹੀਂ ਪੜਦਾ ਕਿਉਂ ਨੀ ਵੱਧਦਾ ਇਹ ਨੂੰ ਸਮਝਾ ਲਿਆ ਸਭ ਕੁਝ ਕਰ ਲਿਆ ਬੋਲ ਵੀ ਜਾਂਦਾ ਫੇਰ ਵੀ ਨਹੀਂ ਵੱਧਦਾ ਸਾਰੀ ਦੁਨੀਆ ਬੰਦੀ ਹੈ ਬਾਣੀ ਵਰਗੀ ਕੋਈ ਚੀਜ਼ ਨਹੀਂ ਸਭ ਕਰਨ ਹੈ ਜਿਹੜਾ ਇਹ ਪੁਨ ਪਾਪ ਕਰਦਾ ਜਿਹੜਾ ਅਸੀਂ ਪੁਨ ਪਾਪ ਕਰਦੇ ਹਾਂ ਕਰਦਾ ਕੁਝ ਨਹੀਂ ਕਰਦਾ ਕੀ ਕਰਦਾ ਆਪਣੇ ਬਣੇ ਇਹ ਸਿਰਫ ਗੱਲ ਇਹ ਆਪਣਾ ਫਿਊਚਰ ਸੰਭਾਲਣ ਦੀ ਹੈ ਫਿਊਚਰ ਬਗਾੜਣ ਦੀ ਗੱਲ ਹੈ ਜਿਹੜੀ ਇੱਥੇ ਉਹ ਸੰਭਾਲ ਦੇ ਵੀ ਜਿਹੜਾ ਇਹਦਾ ਇੱਕ ਨੂਰ ਲੈਣ ਦੇਣਾ ਉਹਦੀ ਗੱਲ ਉਹ ਪੁੱਤ ਪਾਪ ਜੀ ਨੂੰ ਅਸੀਂ ਦਿੰਦੇ ਹਾਂ ਉਹਦੇ ਨਾਲ ਗੱਲ ਹੈ ਵਰਨ ਕੋ ਬਾਵਨ ਨੇ ਆਪਣੇ ਬਾਣੇ ਦੀ ਕੋਈ ਉਦੇਚ ਨਹੀਂ ਉਹਦੇ ਜ ਆਪਣਾ ਬਾਣੇ ਕਿ ਸੋਏ ਜੀ ਕਰੂ ਨਹੀਂ ਚਾਹੁੰਦਾ ਹੋਇਆ ਵੀ ਇਹ ਤਾਂ ਪਾਪ ਹੋ ਜਾਂਦਾ ਜੋ ਇਹ ਕਰਦਾ ਹੈ ਜੀ ਬਣਾਉਣਾ ਹੈ ਨੇ ਪੈਦਾ ਕਰਾਉਣਾ ਪਰਮੇਸ਼ਰ ਨੇ ਤਾਂ ਬਣਾਉਣਾ ਕਰਾਉਣੀ ਹੈ ਉਹ ਜਿਹੜੀ ਪ੍ਰੇਰਣਾ ਉਹ ਉਹਦੀ ਗੱਲ ਉੱਥੇ ਕਿਸੇ ਨੂੰ ਤਾਂ ਆਪੇ ਦੇ ਹੁਦੈ ਜਾ ਕੇ ਸਮਝ ਗਏ ਤੇ ਪਰਵਿਸ਼ਾ ਤਾਂ ਮੰਗਾ ਨਹੀਂ ਕਿਸੇ ਨੂੰ ਪੈਦਾ ਕਰਨਾ ਸੁਵਾਰਨ ਨੂੰ ਪਰਲਾਦਨਾ ਇਹ ਤੈਨੂੰ ਕਾ ਭੇਜੀਓ ਤੇ ਕਰਾ ਰਿਹਾ ਹੈ ਕਰਤਾ ਹੋਏ ਉਹ ਜਿਹੜੇ ਆਪਣੇ ਕੰਮ ਇਹਨਾਂ ਤੇ ਕਰਾ ਰਿਹਾ ਉਹਨਾਂ ਨੇ ਉਹ ਆਪਣਾ ਪਾਣਾ ਅਪਲਾਈ ਕਰਵਾ ਰਿਹਾ ਉਹਾਂ ਆਪਣੇ ਬਾੜਾ ਇਹਦੇ ਰਾਹੀ ਰਿਪਲਾਈ ਰਿਪਲਾਈ ਕਰਵਾਉਂਦੇ। ਉੱਥੇ ਇਹ ਆਪਣੇ ਸੁਭਾਣ ਬਗਾਨਣ ਦੀ ਗੱਲ ਹੈ ਸਿਰਫ ਜਿਹੜੀ ਉਹ ਜਿਹੜਾ ਤੈਨੂੰ ਫਿਰ ਨਹੀਂ ਤੂੰ ਛੱਡਦਾ। ਇੱਥੇ ਕਹਿੰਦੇ ਅਸੀਂ ਕੁਝ ਨਹੀਂ ਉਹ ਤਾਂ ਬੰਦ ਹੈ। ਉਹ ਕਹਿੰਦਾ ਸਾਰੀਆਂ ਕਰਦਾ। ਉੱਥੇ ਦਾੜੀ ਨਹੀਂ ਕਦੇ ਕੀਤੀ। ਉਹ ਤਾਂ ਉਹ ਕਰਦਾ ਉਹ ਤਾਂ ਫਿਰ ਉੱਥੇ ਭਰੀ ਵੀ ਹੈ ਕੁਸ਼ਕਮ ਆਪਣੇ ਉਹ ਇਹੋ ਕਰਦਾ ਉੱਥੇ ਭਰੀ ਵੀ ਹੈ ਉੱਥੇ ਭਰੀ ਵੀ ਹੈ ਜਿਵੇਂ ਕਿ ਪਰਿਪਾਪ ਆਪਣੇ ਬਾਸ ਨਹੀਂ ਤੇ ਉਹਨਾਂ ਦਾ ਬਣਦਾ ਸੀ ਆਲੀ ਬਦਲ ਕੁਛ ਕੰਮ ਕਰਦਾ ਆਪਣੀ ਮਰਜ਼ੀ ਨਾਲ ਜਾਣ ਬੂਝ ਕੇ ਕਾਜਰਾ ਆਪ ਕੇ ਬਾਵਰੇ ਦਾ ਕਾਜ ਵਿਗਾੜੇ ਜਾਣ ਬੂਝ ਕੇ ਹੋਇਆ ਵੀ ਮੈਨੂੰ ਮੇਤੋ ਪਰਫੈਸ਼ਨ ਕਰਾਇਆ ਹੋਰ ਤਾਂ ਜਾਣਦਾ ਨਹੀਂ ਮੈਨੂੰ ਕਿਸੇ ਨੇ ਕਰਾਇਆ ਉਦ ਕਹਦਾ ਬਾਕੀ ਤਾਂ ਐ ਤੇਨਿਕਾ ਦੋ ਬਾਕੀ ਤਾਂ ਐ ਤੇ ਤਾਂ ਕੀ ਫਰਕ ਆਇਆ ਕਹਦਾ ਉਹ ਕਹਿੰਦਾ ਕਹਿੰਦਾ ਵਜ਼ਰ ਪਰ ਬੇਚਰ ਨੂੰ ਨਹੀਂ ਕਰ ਦਿੰਦਾ ਉਹਨੇ ਕੀਤੀ ਕਿ ਆਪ ਕਰਦਾ ਉਥੇ ਉਥੇ ਆਏ ਐ ਐ ਸਾਡੇ ਦਾ ਕਰ ਮੇ ਸੀ ਸਾਡੀ ਬੁੱਧੀ ਹੋਈ ਜੀ ਤੇ ਯਾ ਨੇ ਦੋ ਰਬ ਤੇ ਵਰਦਾ ਉਹਦੇ ਜੀ ਕਾਰਨ ਬਪਰਾ ਕੀ ਕਰੇ ਜੇ ਆਰਾਮਨਗਰ ਸਹਾਏ ਕਿਹੜਾ ਇਹ ਜੋ ਕਾਰਨ ਇਹ ਆਪ ਕਰਦਾ ਵੀ ਹੈ ਇਹ ਕਿੰਨੇ ਕਰ ਸਕਦਾ ਜੇ ਨਹੀਂ ਨਹੀਂ ਉਹ ਸਾਰਾ ਸ਼ਬਦ ਪੜ੍ਹ ਇੱਕ ਪੰਕਤੀ ਲੈ ਜੀ ਉੱਥੇ ਕੁਝ ਪਿੱਛੋਂ ਆਈ ਆ ਕਹਾਣੀ ਉਹਦੇ ਨਾਲ ਦਾਰਨ ਬਪਰਾ ਕੀ ਕਰੇ ਕਾਰਨ ਵੀ ਕੁਝ ਨਹੀਂ ਕਰਦਾ ਰਾਮ ਗੋੜ ਰਾਮ ਗੋੜ ਰਾਮ ਪਰਮੇਸ਼ਰ ਦਾ ਹੱਥ ਲਾ ਲਿਆ ਰਾਮ ਦੋ ਆਬੇ RAM CHATTAR ਜੀ ਉਹ ਜਾਇਬਾ ਤੇ ਨਹੀਂ ਹੁੰਦਾ ਕਾਦੀ ਰਖੜੇ ਨਾਲ ਆ ਕੇ ਉਹ ਹੁੰਦਾ ਬਹੁਤ ਉਹ ਸਤਿਗੁਰ ਦਾ ਲਾਦੀ ਦੀ ਮੰਨਦਾ ਕੱਲਾ ਮਨੇ ਨਹੀਂ ਮੰਨਦਾ ਹੰਦੋ ਲ ਜੇ ਮਨ ਬਾਗੀ ਹੁੰਦਾ ਬਾਣੀ ਤੋਂ ਜਿੱਤ ਵੀ ਦੇ ਨਾਲੇ ਸੰਤ ਜੀ ਨੇ ਤਾਂ ਗੱਲ ਇਹ ਚਿਤ ਹੋਰ ਕੁਝ ਮੰਨੀ ਬੈਠਾ ਪਰਮ ਧਰਮ ਧਰਮੇ ਹੋਰ ਤੇ ਵਿਸ਼ਵਾਸ ਇਹ ਕਰਦਾ ਭਰਮ ਚਈ ਤੇ ਕਹਦਾ ਜਿਨ ਕੇ ਚਿਤ ਕਠੋਰ ਸਭਾ ਇਹ ਬਿਮਾਰੀ ਚਿਤ ਚ ਆ ਨਹੀਂ ਤੇ ਫਿਰ ਉਹ ਦੋਵੇਂ ਕੀ ਕਰ ਤੈਨੂੰ ਆਇਆ ਇਦਾਂ ਜਿਹਨੇ ਕਿ ਦਿੱਤਾ ਘਟੌਰ ਉਹ ਕਹਾਵਾ ਕੋਲ ਕੋਡ ਰੋਡ ਉਨਾ ਬੁਕੇ ਦੇਦਾ ਇੱਕ ਪਾਸੇ ਕੀ ਹੈ ਮਨ ਭਾਉਂਦੇ ਪੀੜੇ ਹੁਕਮ ਅਲੱਗ ਹੋ ਗਏ ਇਹ ਆਪਣਾ ਉਹ ਮੋ ਚੱਲਦਾ ਰਹੇ ਜਿੱਥੇ ਦਖਲ ਦਿੰਦਾ ਹੈ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਪਾਣਾ ਨਹੀਂ ਬਣਦਾ ਹੈ ਮੈਨੂੰ ਕੀ ਮਿਲਣਾ ਹੈ ਕੀ ਨਹੀਂ ਮਿਲਣਾ ਮਿਲ ਵੀ ਰੱਖਣਾ ਉੱਥੇ ਰਹਿਣਾ ਪੈਣਾ ਹੀ ਹੁੰਦਾ ਸੰਸਾਰੀ ਜ਼ਰੂਰ ਦੀ ਗੱਲ ਹੈ ਤੁਹਾਡੀ ਪ੍ਰੋਸਪਰਿਟੀ ਦੀ ਗੱਲ ਹੈ ਪਾਣੀ ਨੂੰ ਸੁੱਕ ਕੇ ਪੜ ਕੇ ਭੁੱਲਣ ਦੇ ਨਾਲ ਵੀ ਇਹ ਤਾਂ ਸਾਡਾ ਬੋਲੀ ਲੱਗਦਾ ਵੀ ਤੂੰ ਕਿਰਪਾ ਕਰ ਮੇਰੀ ਸਮਝ ਆ ਜਾਈਵੇ ਇਹ ਵੀ ਲੱਗਦਾ ਹਰ ਵਕਤ ਹਰ ਗਲਤੀ ਜੇ ਕਿਰਪਾ ਆਪਾਂ ਬੁਣਦੇ ਰਹੀਏ ਜਿਹੜੇ ਐ ਕੋਈ ਨਕਸਾ ਐ ਕੋਈ ਨਕਸਾ ਮੇਰੀ ਨਹੀਂ ਸਮਝ ਆਉਂਦੀ ਮੇਰਾ ਮਨ ਨਹੀਂ ਮੰਦਾ ਮੇਤੋਂ ਮੇਰਾ ਮਨ ਨਹੀਂ ਮੰਦਾ ਉਹਦਾ ਪਰਮੇਸ਼ਰ ਨੂੰ ਵੀ ਕਹਿ ਸਕਦਾ ਵੀ ਤੂੰ ਵੀ ਵਰਦਕਰ ਮੇਰੀ ਕੋਈ ਬਈ ਵੀ ਸ਼ਕਤੀ ਦੇ ਮਾਇਬਾਨੂ ਗੁਰਾ ਉਹ ਕਹਿੰਦਾ ਕੋਈ ਜਿਹੜਾ ਇਹ ਕਹਿੰਦਾ ਉਹਦਾ ਮਨ ਮੰਨਦਾ ਜੇ ਤੇ ਤੇ ਬੰਦ ਨਹੀਂ ਚੱਤਦੀ ਉਂਦੀ ਕਿਹਦੇ ਨੂੰ ਬੁਲਾਦਾ ਸਕਦੇ ਮੇਰਾ ਹੱਥ ਰਵਾ ਦੇ ਨਾਲ ਇਤੋਂ ਬਦਲ ਨਹੀਂ ਸਕਦੀ ਲੈ ਸਕਣ ਆਪੇ ਫੈਸਲਾ ਲੈ ਲਿਆ ਮੇਰੇ ਤੇ ਚੱਕੇ ਨਹੀਂ ਹੋਣ ਤੇ ਦੂਜੇ ਨੂੰ ਕਿਰਪਾ ਦੀ ਕੀ ਲੋੜ ਹੈ ਇੱਥੇ ਚੱਕਣਾ ਨਹੀਂ ਜਾਂਦਾ ਮਤਲਬ ਫਿਰ ਹੋ ਹੀ ਪੂਰਾ ਸਿੱਖਾਂ ਵਿੱਚ ਆਹ ਦੇਖਾ ਆ ਜਾਂਦਾ ਆ ਇਹ ਹਾ ਹਾਕਾ ਬਾਅਦ ਹੁੰਦਾ ਤੁਸੀਂ ਪਾਣੀ ਚੱਕਣ ਤੋਂ ਬਾਅਦ ਨੂੰ ਹੁੰਦਾ ਰਹੇ ਫਿਰ ਉਹ ਕਿਰਪਾ ਮੰਗ ਲੈਂਦਾ ਪਾਈ ਹੋ ਮੈਂ ਹੀ ਆਪਣੀ ਕੋਸ਼ਿਸ਼ ਕਰੀ ਤਾਂ ਕਹਿੰਦੇ ਇੱਕ ਗੱਲ ਗਲਤ ਚੱਕਣ ਵਾਲੇ ਨੂੰ ਪਤਾ ਮੈਨੂੰ ਗੱਲ ਗਲਤ ਹੈ ਚੱਕਣ ਵਾਲੇ ਨੂੰ ਪਤਾ ਹੁੰਦਾ ਕੋਈ ਇਹ ਜੀ ਵਿਸਾਖ ਖਾਣ ਕੋਈ ਇਹ ਜੀ ਵਿਸਾਖ ਲੈ ਜੀ ਹੋ ਗਿਆ ਇਹ ਕੋਰੋਂ ਪ੍ਰਿੰਟ ਗੱਲ ਕਰਕੇ ਦੇਖ ਨਹੀਂ ਬੰਡ ਚੁਕਾਤੀ ਹੋਵੇ ਨੂੰ ਹੰਕਾਰ ਹੋ ਗਿਆ ਬੰਡ ਚੁਕਾਤੀ ਹੋਵੇ ਨਾ ਕਿਸੇ ਦੇ ਕੋਈ ਭਗਤ ਇਹ ਜਾ ਹੋਵੇ ਕੋਈ ਰਿਕਾਰਡ ਹੋਵੇ ਕੋਈ ਪੰਕਤੀ ਆਈ ਹੋਵੇ ਤੋ ਕਾਈ ਹੋਵੇ ਕਿੱਥੋਂ ਪੈਦਾ ਹੋਈ ਇਹ ਕਹਾਣੀਆਂ ਇਹ ਤਾਂ ਪੂਰਾ ਸਮਝੇ ਹੋਏ ਨਹੀਂ ਕੋਲ ਇਹ ਫਤਹਿ ਤਾਂ ਪੁਰਾਣੀ ਪੁਰਾਣੀ ਪਹਿਲੋ ਹੰਕਾਰ ਹੁੰਦਾ ਮੈਂ ਕਹਿੰਦਾ ਨਹੀਂ ਸਹਾਈ ਮੰਗਦਾ ਨਹੀਂ ਪਹਿਲੋ ਹੰਕਾਰ ਹੁੰਦਾ ਸਗੋਂ ਜਿਹੜਾ ਜਿਹੜਾ ਹੰਕਾਰ ਹੀ ਨਹੀਂ ਸਹਾਈ ਦਿੰਦਾ ਸਗੋਂ ਮੈਂ ਆਪੇ ਕਰ ਲਉ ਅਸਲ ਜਦੋਂ ਹੰਕਾਰ ਹੈ ਉਹ ਤਾਂ ਹੰਕਾਰ ਸਹਾਈ ਤਾਂ ਰੁਗੜ ਦਿੰਦਾ ਹੀ ਨਹੀਂ ਪੰਡ ਆਪ ਚੱਕ ਸਕਦਾ ਹੀ ਨਹੀਂ ਆਪਣੇ ਚੱਕੜ ਵਾਲੀ ਹਯੋ ਨਹੀਂ ਕਹਿੰਦਾ ਮੈਂ ਮੱਲੇ ਵੀ ਆਪਣੇ ਚੱਕੜ ਇਹ ਪੰਡਤਾ ਚੱਕੀ ਜਾਂਦੀ ਐ ਮਨੂ ਹੋ ਜਾਂਦਾ ਕੋਈ ਵੀ ਭਲੇਖਾ ਹੋਇਆ ਉਹ ਵੀ ਉਹ ਵੀ ਸਾਨੂੰ ਭਲੇਖਾ ਐ ਉਹ ਉਹ ਵਾਲਾ ਤਾਂ ਹੀ ਐ ਨਾ ਉਹ ਭਲੇਖੇ ਛੋਟੀ ਜੀ ਗੱਲ ਉਹ ਉਹ ਸੰਸਾਰੀ ਕੰਮ ਮੇਰੇ ਹੋ ਜਾਂਦਾ ਐ ਹਾਂ ਸੰਸਾਰੀ ਉਹ ਤਾਂ ਕਾ ਉਹ ਇਹ ਨਾ ਰਿਆ ਬਾਉਂਦਾ ਕੰਮ ਖਸਿਆ ਪਰ ਇਹ ਬੰਦ ਦੂਜੀ ਦੀ ਗੱਲ ਨਾ ਜਿਹੜੀ ਜਿਹੜਾ ਗੱਲ ਬਈ ਇਹ ਸਮਝ ਆ ਬੇ ਮਨ ਮਨ ਜਵੇ ਤੂੰ ਜਾਣ ਜਿਸ ਵਲ ਟੂਲੇ ਦਿੱਤੇ ਅਮਰਤ ਪਹੜ ਦੇ ਅਮਰਤ ਕਹਿ ਰਹੇ ਆ ਪਰ ਤਾਂ ਕੋਈ ਗੱਲ ਨਹੀਂ ਕੋਈ ਅਮਰਤ ਦੇ ਵਾਲੀ ਚੀਜ਼ ਜਿਹੜੀ ਵਧੀਆ ਉਹ ਤਾਂ ਸ੍ਰੇਸ਼ਟ ਜੀ ਹੁੰਦੀ ਹੈ ਛਕੜ ਵਾਲੀ ਉਹ ਨੂਰ ਬਲਤ ਹੈ ਪਾਸ਼ਾ ਦੇ ਵਿੱਚ ਸੰਧਾਰੀ ਪਾਸ਼ਾ ਚਾਹ ਮਨ ਦੇ ਛਕੜ ਵਾਲੀ ਚੀਜ਼ ਅਲੱਗ ਵਰਤ ਹੈ ਸਰੀਰ ਦੇ ਛਕੜ ਵਾਲੀ ਦਾ ਤੋਤਹ ਉਹ ਤੇwidehat ਜਿਹੜੀ ਵਾਇਰ ਦੀ ਬਲਾਈ ਉਹ ਕੀ ਲੋਡ ਸੀ ਇਹ वाइब्रू जी का खालसा वाइब्रू जी की फतेह क्यों बलाई कीमत लती है ना हद तक कोई होयो नहीं काजी बता दीजिए क्यों बताऊं राय जी कई सवाल पैदा होया है ये सवाल पैदा कीता आया सैडे ये डिस्कस होया है मगर की दी ਇਹ ਵਜ੍ਹਾ ਸੀ ਸਾਨੂੰ ਪਹਿਲੀ ਨਜ਼ਰ ਲੱਗਦਾ ਕੋਈ ਫਤਿਹ ਦਾ ਤਾਂ ਸਵਾਲ ਨਹੀਂ ਸੀ ਹੀ ਲੱਗਦਾ ਫਤਿਹ ਦਸਪਾਸ਼ੇ ਨੇ ਇੱਥੇ ਕਿਉਂ ਰਖਤੀ ਕੋਈ ਫਤਿਹ ਦਾ ਤੇ ਬਹੁਤ ਵੱਡੇ ਫਤਿਹ ਹੋਈਏ ਤੇ ਮਨ ਮੰਨੇ ਉਹ ਜਿਹੜਾ ਰਾਜ਼ ਅੰਸਾਰੀ ਛੱਡ ਕੇ ਦੂਹੇ ਰਾ ਚੱਲਣ ਨੂੰ ਤਪਦੇ ਉਹ ਯਾਰ ਤਪਦੇ ਬਾਈ ਮਨਜੀ ਹਾਂ ਮਾੜੇ ਹਾਰਬ ਨੇ ਤਾਂ ਇਹ ਵੀ ਬਦਲ ਰੱਖ ਦਿੱਤੀ ਸਾਨੂੰ ਕੀ ਪਤਾ ਵੀ ਕੀ ਸੀ ਧਰੂ ਇਹ ਵੀ ਬਦਲ ਰੱਖ ਦਿੱਤੀ ਇੱਥੇ ਲੈ ਕਿ ਮਨੁੱਖਾ ਬੋਲਿਆ ਪੰਜ ਵਾਰ ਕਾ ਮਾੜੇ ਹਾਰਬ ਨਹੀਂ ਹੈ ਉਥੇ ਆਪਣਾ ਰਸਤਾ ਬਦਲੇ ਹੈ ਮੁਖ ਤੋਂ ਗੁਰਮੁਖ ਹੋਇਆ ਤੋਂ ਦੇਵਤਾ ਹੋਇਆ ਹੈ ਮਨੁਸਤੋਂ ਦੇ ਮਨੁਸਤੋਂ ਦੇਵਤਾ ਹੋਇਆ ਹੈ ਕੀ ਮਨੁਸਤੋਂ ਦੇਵਤਾ ਹੋਣ ਦਾ ਪਰਿਵਰਤਨ ਨਹੀਂ ਹੈ ਹੈ ਮਨ ਮੰਨੇ ਜਾਂ ਮਨ ਮਨੇ ਹਾਰ ਮੰਨੀਏ ਤਾਂ ਫਤਿਹ ਹੋਈ ਹੈ ਪਹਿਲੀ ਸਟੇਜ ਦੀ ਫਤਿਹ ਕਿਸੇ ਦੀ ਰਹਿਮਾਈ ਚੱਲਣ ਨੂੰ ਜ਼ਰੂਰ ਹੈ ਬਸ ਤਿਆਰ ਹੀ ਨਹੀਂ ਹੁੰਦਾ ਕੋਈ ਜਿਹੜੀ ਰਹਿਮਾਈ ਚੱਲਣ ਨੂੰ ਅਗੋਂ ਮਨ ਮੰਨੇ ਆਣਾ ਮਨ ਮੰਨਿਆ ਤੋ ਹਰ ਜਗ੍ਹਾ ਐ ਉਹ ਨਹੀਂ ਲਖਦੀ ਉਹ ਤੇ ਫਤਿਹ ਲੋਕ ਨਾਮ ਦਿੰਦੇ ਨੇ ਦਿੰਦੇ ਨੇ ਨਾ ਲੋਕ ਬਾੜਾ ਦਿੰਦੇ ਨੇ ਉਹ ਤੇ ਕਿਉਂ ਨੀ ਦਿੱਤੀ ਬਾੜਾ ਕਿਉਂ ਨੀ ਦਿੱਤਾ ਨਾਮ ਬਾੜਾ ਨਾਮ ਨਹੀਂ ਦਿੱਤਾ ਸੋਚੀ ਦਿੱਤੀ ਹੈ ਪਹਿਲੀ ਫਤਿਹ ਹੋਗੀ ਤੇਰੀ ਪਹਿਲੀ ਫਤਿਹ ਪ੍ਰਾਪਤ ਕਰਨ ਲਈ ਮੰਨ ਤੇ ਪਹਿਲੀ ਸਟੇਜ ਵਾਲੀ ਫਤਿਹ ਹੋਗੀ ਇੱਕ ਵਧੇ ਹੋ ਰਿਹਾ ਹੈ। बस दो जगह। दो जगह। तो जीया ਅਤੇ ਬਈ ਬਨਜੀਤ ਮਨ ਮੰਨਣਾ ਹੋਰਗਾ ਲਾ ਬਨ ਜਿਤਾਣਾ ਹੋਰਗਾ। ਇਹਨਸੇ ਟੁਰਪੇ ਟੁਰਪੇ ਕੋਈ ਮੋੜਾ ਹੀ ਨਹੀਂ ਸੇ ਰਸਤੇ ਵਾਪਸ ਉਗਲ ਹੋ ਰ ਹੈ ਆ ਪੱਟੇ ਬੰਨਦੇ ਅੱਗੇ ਜੋ ਹੋਵੇ ਸੋ ਅੱਗੇ ਹੋਵੇ ਸੋ ਹੋਵੇ किदा सद्कर्म असे तुरपे बगाड़े कहां चली सर हो पैर दत्ता ही नहीं रा राजपूत रा ते चाले ना बोल रहा आ पाछे फेर ना बोल रहा समझी तुरता पे आ थोरे नु पिछे पीछे नु नहीं कहां नहीं जाने तुरे चल गाय कर साधु को मिलने जाइए ਸਾਂਭਣਾ ਲਈ ਕੋਏ ਪਾਚੇ ਪਾਉਨੋ ਦੀਜੀ ਅਗੇ ਹੋਏ ਤੋਂ ਜਿਹੜੇ ਅਗੇ ਹੋਏ ਤੋਂ ਦੀ ਹੋਗਾ ਰੋਗੇ ਕਹਿੰਦੇ ਜਿਹੜੇ ਜਕਾਂਦ ਕਰਦਾ ਬਜਾਲੇ ਕਰੇ ਉਹ ਮੇਰਾਬੇ ਦੇ ਕੇ ਫੇਰਾਗੇ ਭਾਂਡੇ ਸੰਚੇ ਦੇ ਰਹਿਗੇ ਸਮਝਿਆ ਜੀ ਪਹਿਲੀ ਵਾਰ ਇਹ ਹੋਗੀ ਪਰ ਆਖਰੀ ਨਹੀਂ ਹੋਈ ਪੰਜ ਵਾਰੇ ਬੰਦੇ ਨਿਕਲੇ ਰ ਤੋ ਹੋਈ ਜੇ ਦਿੱਕਾ ਕਿ ਹਾਂਜੀ ਜੋਤਿਸ ਭਾਵੈ ਸੋਥੀਏ ਕਹਿਣਾ ਕਿਛੂ ਨਾ ਜਾਏ ਜੋਤਿਸ ਭਾਵੈ ਸੋਥੀਏ ਕਹਿਣਾ ਕਿਛੂ ਨਾ ਜਾਏ ਜਿਹੜਾ ਇਹਨੂੰ ਚਾਹੁੰਦਾ ਨਾ ਇੱਕ ਹੈ ਜਿਹੜਾ ਇਹ ਜਿਹੜਾ ਇੱਕ ਬੰਦੇ ਇੱਕ ਜਿਤੋਂ ਕੇ ਫੈਸਲਾ ਕਰ ਲੈ ਲੈਂਦਾ ਉਹਦੇ ਵਿੱਚ ਕੋਈ ਦਖਲ ਨਹੀਂ ਦੇਂਦਾ ਬਸ ਉਹਦੇ ਕੋਈ ਕਿਸੇ ਦਾ ਨਹੀਂ ਤਾਰਾ ਨੂੰ ਨਾ ਬਗਾ ਜਦੋਂ ਕਾਇਤਰੀ ਮਰਜੀ ਜਿਹੜਾ ਕੋਈ ਨਾਵਨ ਨੇ ਆਪਾਂ ਕਿਸੇ ਦਾ ਰਾਜੀ ਨਾ ਕਰਾਉਣ ਚਲੇ ਜੇ ਇੱਕ ਵੱਡਾ ਨਾਵਨ ਕੀ ਕਰਾਂਗੇ ਆਪਾਂ ਤਸਵੀਰ ਕਰਾਉਂਦੇ ਆ ਜਣੇ ਭਾਈ ਇਹਦੀ ਮਰਜ਼ੀ ਆ ਜਰ ਵਦਾ ਚਿੱਤ ਵੀ ਮਨ ਮੇਰਾ ਮਨ ਨਹੀਂ ਮੰਨਦਾ ਮੈਂ ਕਹਿੰਦਾ ਫੇਰ ਕੌਣ ਉਹ ਚਿੱਤ ਜਿਹੜਾ ਕਿ ਚਿੱਤ ਜਿਹੜਾ ਕਿ ਹਿਰਦਿਆਂ ਮਾਇਆ ਕੇ ਸਿਆਣੇ ਕੇ ਪ੍ਰਸੀਦੇ ਬਾਹਰ ਨਾਲ ਚਲ ਇੱਕੋ ਹੀ ਐ ਇਹ ਨਾ ਵਿਗੜਿਆ ਇੱਕੋ ਹੀ ਆ ਸਮਝਾਉਂਦੇ ਦਾ ਉਹ ਵੀ ਤੂੰ ਇਹਨੂੰ ਸਮਝਾ ਲੈ ਤੇਰਾ ਬੰਦ ਖਰਾਬ ਹੋਇਆ